ਮੰਗਲਾ ਚੰਨ ਦੀ ਗੱਲ ਕਰਦੇ ਸੀ ਜੀ ਮੰਗਲਾ ਚੰਨ ਜਿਵੇਂ ਆਇਆ ਕਹਿੰਦੇ ਹੁਣ ਆਜੂਰੇ ਨਵਾਂ ਜਾਂ ਜਿਵੇਂ ਕੋਈ ਨਵੀਂ ਬਾਣੀ ਸਟਾਰਟ ਹੁੰਦੀ ਐ ਉਹ ਤੇ ਅਸੀਂ ਬਗਲਾ ਗੁਰਬਾਣੀ ਤੇ ਕਹੇ ਨਹੀਂ ਸਕਦੇ ਸਾਰੀ ਗੁਰਬਾਣੀਆਂ ਬੱਗ ਲਗਾਏ ਕੀ ਹੁੰਦਾ ਹੈ ਮੇਰੇ ਨਾਲ ਉਹ ਦਾਹਾ ਬੰਗਲ ਵੀ ਚਾਹੀਦਾ ਹੈ ਮਹਾਰਾਜਾ ਜੀ ਬੰਗਲ ਬੰਗਲ ਲੈ ਗਏ ਬਾਹਾਂ ਦੀ ਗੁਰਬਾਣੀ ਜੀ ਦਾ ਜੋ ਵੀ ਇਹ ਨਾਲ ਆਪਣੇ ਤੇ ਰੀਪਸ ਕਰ ਉਹ ਤੋਂ ਪਹਿਲਾਂ ਗੱਲ ਸਮਝੋ ਬਰਤ ਜੀ ਇਹ ਗੱਲ ਉਹ ਸਖੀਆਂ ਬੰਗਲ ਗਾਏ ਸਾਰਾ ਨੁਕਲਾ ਚੜ੍ਹਦੀ ਗੁਰਬਾਣੀ ਉਹ ਬਗਲਾ ਚੜ੍ਹਨ ਸੱਜਣਾਂ ਨੂੰ ਲੈ ਜੇ ਸਿਰਸਰਾ ਕੀ ਦੀ ਹੈ ਇਹ ਹੈਡ ਹੈ ਦਾ ਉਹ ਸਾਡੇ ਹੋ ਵਿਸ਼ਾ ਵਸਤੂ ਹੈ ਉਹ ਸ਼ਬਦ ਦਾ ਇਸ ਬਾਣੀ ਦਾ ਵਿਸ਼ਾ ਵਸਤੂ ਕੀ ਹੈ ਇਹਦੇ ਚ ਕੀ ਦੇਣਾ ਚਾਹਿਆ ਕੀ ਦੀ ਜਿਵੇਂ ਅੱਛੇ ਦਾ ਆਪਣਾ ਹੈਡ ਨਹੀਂ ਹੁੰਦਾ ਹੈਡ ਸਾਰੀ ਬੰਦੀ ਦਾ ਇੱਕੋ ਹੈਡ ਹੈ ਗੱਲ ਇੱਕੋ ਹੀ ਹੈ ਕੋ ਹੈਡਰ ਦਾ ਮਤਲਬ ਹੈ ਉਸੇ ਇੱਕ ਦੀ ਗੱਲ ਚੱਲਦੀ ਹੈ ਇਕੱਠ-ਕੱਠਾ ਹੋਰ ਕੋਈ ਗੱਲ ਨਹੀਂ ਜੇਕਰ ਸੀਤਾ ਲਛਣ ਵਿਛੜ ਗਿਆ ਆ ਗਿਆ ਤਾਂ ਸੁਵੇ ਨਹੀਂ ਕੋਈ ਬੀਜਾ ਬਦਲ ਜਾ ਸਾਡਾ ਵਿਸ਼ਾ ਵਸੂਈ ਕੋਈ ਹੈ ਜੋ ਸ਼ੁਰੂ થાય ਜਬ ਜੀਸਾ ਜੋਹੀ ਅਖੀਰ ਚ ਬੁਰਾਣੀ ਜਾਗੇ ਵਿਸ਼ਾ ਵਸੂਈ ਨਹੀਂ ਬਦਲਿਆ ਕਦੇ ਵੀ ਮਿਹਰਬਾਨੀ ਦਾ ਜੇ ਤੱਕ ਸੀਤਾ ਤੇਤਾ द्वंद मैशा वस्तु बदल गए आजकल आ एक समस्या है वो जो मैशा वस्तु है वो हैडिंग बोलता है हेडर उमेशObjectType है इन्हें हेडिंग भी अपन ने दिण दिण है की है हेडन उन्होंने ऐसे क्या शब्द है हेडन ग्रेजी वाला शब्द है हेडन भाषा दुज्ञान की भाषा है ਹੈਡਰ ਵਿੱਚ ਥੱਲੇ ਵੇਖੇ ਬਿਸ਼ਾ ਵਸਤੂ ਇਹ ਕਾਹਨੂੰ ਬੇਜੀ ਤੋ ਸਾਡਾ ਬਿਸ਼ਾ ਵਸਤੂ ਹੈ ਲਓ ਸਰਬੋਤਮ ਥਾਂ ਵਿੱਚ ਬਿਸ਼ਾ ਵਸਤੂ ਹੁੰਦਾ ਸਬਜੈਕਟ ਵਾਇਦਰ ਸਬਜੈਕਟ ਹਾਂ ਸਬਜੈਕਟ ਪ੍ਰੈਜੈਂਟ ਸਬਜੈਕਟ ਅਸੇ ਭਰੂ ਸ਼ਬਦ ਜਿਹੜਾ ਹਰੇ ਸ਼ਬਦ ਦੇ ਮੂਲੇ ਰੱਖਿਆ ਹੈ ਕਮਕਲ ਬਾਦੂ ਗੋਪਰ ਸਾਹਿਬ ਜਿਹੜਾ ਹੈਗਾ ਭਾਈ ਇਹਦਾ ਮਤਲਬ ਇਹ ਹੈ ਕਿ ਸਬਜੈਕਟ ਗਿਆਨ ਜੇਤਾ ਕੀਤਾ ਤੇ ਤਰ ਨਾ ਹੀ ਕੋਈ ਥੋ ਬਸ ਕੋਈ ਤੇ ਵੀ ਨਹੀਂ ਕੋਈ ਥਾਂ ਨਹੀਂ ਗੁਰਬਾਨੀ ਹਰ ਜਗ੍ਹਾ ਨਾਮ ਦੀ ਗੱਲ ਹੈ ਉਹ ਜਿਹੜਾ ਕੱਲ ਕਿਹਾ ਸੀ ਵੇਦ ਪੁਰਾਣ ਸਿਬਿਟੀ ਸੁਦਾਖਰ ਆਏ ਜ਼ਰੂਰ ਨੇ ਲੱਖ ਵਾਰੀ ਸਿਬਿਟੀ ਜ਼ਰੂਰ ਨੇ ਆਓ ਆਜਾ ਮਹਲ ਪਾਪੀ ਜਾਗ ਜਾਣੇ ਕਿਹਾ ਜ਼ਰੂਰ ਹੈ ਪਰ ਤੁਹਾਡੇ ਵਾਲੇ ਹੋ ਜਾ ਨੂੰ ਡਰ ਨਹੀਂ ਜਾਂਦਾ ਸਾਡੇ ਵਾਲੇ ਨੂੰ ਸਾਡਾ ਸੱਚਾ ਜਾਣਦਾ ਸਾਡਾ ਜਹਲ ਹੋਰ ਹੈ ਤੁਹਾਡਾ ਹੋਰ ਹੋਊਗਾ ਸਾਡਾ ਆਰਾਮ ਜ਼ਰੂਰ ਹੈ ਪਰ ਥੋੜੇ ਵਾਲਾ ਵੀ ਸਾਡਾ ਸਵੇ ਘਟ ਰੰਗ ਬੋਲੇ چاہے ਮੁਸਲਮਾਨ ਹੈ ਜਾਂ ਇਸਾਈ ਹੈ ਆ ਜਾਨਵਰਾਂ ਵੀ ਚਰਾਸੀ ਲੱਖ ਜੂੜ ਕੇ ਬੋਲਦਾ ਅੱਜ ਵੀ ਜੇ ਨਹੀਂ ਬੋਲਦਾ بس ਇਹੋ ਜੋੜ ਕੇ ਚਾਹ ਕੇ ਸਚਨਾ ਗਲਮ ਲਾਉਂਦਾ ਜੋਤਨਾ ਗਲਮ ਲਾਉਂਦਾ ਜੀਅਤ ਕੋ ਚਾਹ ਕੇ ਉਹਦਾ ਆਰਾਮ ਜਾਤ ਹੈ ਸਰੀਰ ਹੈ ਸਰੀਰ ਦੀ ਬੋਲ ਰੱਖਣੇ ਅੱਜ ਕੋ ਉਹ ਫੰਟੀ ਆ ਗਈ ਸੀ ਉਹ ਪੁੱਜਦੀ ਗੁਰਦੀ ਮੈਂਗਾ ਗੁਰਦੀ ਕੁਤੂ ਜਿਵੇਂ ਪੇਟ ਬਣਾਣੇ ਸੀ ਇਹ ਲੋ ਉੱਤਰੇ ਢਲੇ ਚਾਰ ਪੌੜੀਓ ਜਿਹੜੇ ਥੱਲੇ ਉਤਰਾਂਗੇ ਹੁਣ ਪਤਾ ਲੱਗੂ ਗੁਰਬਾਨੀ ਹੈ ਕੀ ਉਹ ਵਿਦਵਾਨ ਵਾਲੀ ਉਹ ਗੱਲ ਚੱਲੀ ਆ ਹੁਣ ਤੇ ਆਪਣੀ ਹਾਂ ਅਜੇ ਮੁਤਵਾਨ ਨਾਲ ਗੱਲ ਨਹੀਂ ਚਲੀ ਆ ਜੀ ਹੁਣ ਬੇਸ਼ੇਬਸਦ ਵਾਲੀ ਗੱਲ ਆ ਚੱਗੀ ਵਿਦਵਾਨਾਂ ਦੇ ਲੈਵਲ ਤੇ ਇਹਦਾ ਝਗੜਾ ਹੀ ਰਿਹਾ ਹੁਣ ਜੀ ਵੇ ਉੱਤੇ ਚਾਹੀਦਾ ਥੱਲੇ ਹੀ ਜਾਈਂਦਾ ਪਿੱਛੇ ਮੰਨ ਜੈਸੀ ਉਹ ਬੰਦੇ ਸੀ ਜਿਹੜੇ ਉਹ ਵੀ ਬਿਗਵਤਾੜੀ ਗੱਲ ਸੀ ਮੇਰੀ ਜਿਹੜੀ ਨੀਲ ਸੀ ਜਿਹੜੀ ਉਹ ਵੀ ਸਰ ਤਾਂ ਹਟਾਉਂਦਾ ਜਿਹੜੀ ਨੀਲ ਦਿੱਤੀਆ ਉਹ ਬਿਗਵਤਾੜੀ ਗੱਲੀ ਲੈ ਸੀ ਜਦ ਬਨੇ ਰਹੇ ਫਰੈਂਡ ਜਿਹੜੀ ਨੀਲ ਰਕੇ ਸ਼ਾਰਦ ਵਿਚੋਂ ਉਹ ਫਰੈਂਡ ਕੀ ਕਰਦਾ ਸੀ ਮੈਂ ਕਿਹਾ ਵੀ ਉੱਤੇ ਜਿਹੜਾ ਰਾਤ ਥੱਲੇ ਨਹੀਂ ਆ ਸਕਦਾ ਨਾ ਉੱਤੇ ਨਹੀਂ ਆ ਸਕਦਾ जे राग उठे आ गया जो कुछ लिखा गया thole sab raag da hissa हो gaya हो गया ना हो गया फिर की है यही जरा मंत्र बुलबुतल गुरुसी कह दे ये राग ये हरेक राग छे गाया जा सकदा है हरेक राम दा हिस्सा बणो राग का मतलब की रह गया राग دیو मात्रा दा राग दे डिफरेंस की रह गए ये गल अदलील बटिल सी ਸਾਰੇ ਵਿਦਵਾਨ ਤੁਹਾਨੂੰ ਕਹਾਂ ਠੀਕ ਹੈ ਉਹ ਨਹੀਂ ਵਸ ਰਾਂ ਲੋਹੀ ਗੱਲ ਹੈ ਫਰੇਗ ਰਾਗ ਕਿਵੇਂ ਹੋਜੀ ਜੇ ਰਾਗ ਬਦਲੂ ਮਾਤਰਾ ਬਦਲੂਗੀ ਵਿਦਿਆਲ ਬਦਲੂਗੀ ਆਲ ਬਦਲੂਗੀ ਫਿਰ ਉਹਨਾਂ ਨੇ ਹਾਂ ਰਾਗ ਦਿੱਤੇ ਜੀ ਫਿਰ ਇਹ ਬਿਸ਼ਵਸੂ ਹੈ ਜਦ ਮਹੱਲਾ ਜਿਹੜਾ ਲਫ਼ਜ਼ ਲਿਖਿਆ ਇਹ ਪੰਜਵੇਂ ਪਾਸ਼ਾ ਦਾ ਲਿਖਿਆ ਹੋਇਆ ਇਹ ਦੱਸਣ ਵਾਸਤੇ ਤਾਂ ਕਿ ਅਲੱਗ-ਅਲੱਗ ਰਹੇ ਜਿਹੜੇ ਜੜੀਆਂ ਪੁੱਤੀਆਂ ਸੀ ਆ ਥੋੜੀਆਂ ਲੱਗੀਆਂ ਜਦੋਂ ਸਾਡੇ ਕੋਲ ਸਨ ਕਿਸੇ ਆਦਮੀ ਨੇ ਆਪਣੀ ਵਾਲੀ ਲਿਖਤੀ ਲਗਾਤਾਰ ਲਗਾਤਾਰ ਲਿਖਤੀ ਰਾਗ ਜੁਗ ਲਿਖਦੇ ਸੀ ਇਹ ਥੋੜਾ ਰਾਗ ਬਦਲਿਆ ਥੋੜਾ ਆ ਬਦਲਿਆ ਸ਼ਬਦ ਲਗਾਤਾਰ ਲਿਖੇ ਉਹਨੇ ਆਪਣਾ ਮੱਲਾ ਆਪਣਾ ਨਾਮ ਧੋੜੀ ਲਿਖੇ ਨਾਮ ਕਰਾਉਂਦੇ ਲਿਖੇ ਇਹ ਪਤਾ ਸੀ ਕਿ ਪੰਜਾਬੀ ਦੀ ਬਾਣੀ ਸਿੱਖਾਂ ਨੂੰ ਪਤਾ ਹੀ ਸੀ ਨਾਲੇ ਹੀ ਸਿੱਖ ਘਰੇ ਸੀ ਸਾਡੇ ਕੋਲੇ ਰਹੀ ਅਸੀਂ ਜਿਹੜਾ ਕੰਮ ਵੇਚਣ ਗਏ ਹਾਂ ਚੱਲ ਲਿਖਿਆ ਗੁਰੂਗ੍ਰਾਮ ਸਾਹਿਬ ਪਾਣੀ ਮੇ ਬਾਸਾ ਸੀ ਉਹਨਾਂ ਨੇ ਰਾਘਵਾਈ ਉਹਨਾਂ ਦੇ ਨਾਲ ਮਹਲੇ ਬਾਟੇ ਰਾਘਵਾਈ ਦੋਨਾਂ ਨੇ ਕੀਤੇ ਬਾਣੀ ਰਾਘਵਾਈ ਤਾਂ ਨਹੀਂ ਹੋਈ ਉਸ ਤਾਂ ਆਏ ਪਹਿਲਾਂ ਮਹਲੇ ਦੀ ਆ ਗਈ ਉਹਨਾਂ ਨੇ ਕੀਤੇ ਬਾਣੀ ਪਹਿਨੇ ਕਿਤੇ ਮੈਂ ਇੱਕੋ ਥੀ ਨੂੰ ਚੱਕ ਕੇ ਇੱਕੋ ਜਗ੍ਹਾ ਕਰ ਦਈਏ ਫਨ ਪਾਸਾ ਵੀ ਫਾਨੀ ਸਾਰੇ ਰਾਗਾਂ ਦੀ ਇੱਕੋ ਜਗ੍ਹਾ ਕਰ ਦੇ ਚਲੇ ਜਾਈਏ ਇਹ ਜਗ੍ਹਾ ਕਰ ਗੁਤੇ ਤਾਂ ਇਹ ਅਬਸੂਰਟੀ ਤੇ ਸਪਤਰੀ ਸੀ ਹੋ ਸਕਦੇ ਸਾਰਿਆਂ ਦੇ ਵਿਚਾਰ ਉਸੇ ਰਾਗ ਦੇ ਵਿੱਚ ਉੱਠੀ ਬੋਲੇ ਉਸੇ ਰਾਗ ਜੇ ਉੱਥੇ ਸਾਡੇ ਕੋਲ ਹੈਗੇ ਤਾਂ ਸਾਨੂੰ ਪਤਾ ਲਗੂ ਰੱਬ ਦੇ ਵਿੱਚ ਕੀ ਮਤਲਬ ਹੁੰਦਾ ਰਾਖਾ ਦਾ ਸਾਡੇ ਆਦੇ ਨਹੀਂ ਸਾਾਨੂੰ ਸੌਖਾ ਕੀਤਾ ਸੰਬਾਧ ਦੇ ਵਿੱਚ ਉਸ ਰਾਗ ਦੇ ਵਿੱਚ ਕੰਪੈਰੀਸਨ ਕਰਤੀ ਕਰ ਲਈਏ ਵੀ ਦੇਖੋ ਆ ਕਬੀਰ ਦੀ ਬਾਣੀ ਪਈ ਹੈ ਚਾਹ ਪਿੱਛੇ ਚਾਹ ਅੱਗੇ ਆ ਪਈ ਤਾਂ ਉਸ ਰਾਗ ਤੇ ਹੈ ਕਬੀਰ ਦੀ ਬਾਣੀ ਵਿੱਚ ਤਾਂ ਰੱਖੀ ਹੈ ਫਸਾਂ ਜੀ جے پختونے بانی جڑی سی عام پبلک واسطے نہیں سی۔ ساری پختون عام پبلک دے مقبول نہیں ہوئے۔ پتا نہیں گل اگے چل نہیں سکدی۔ پختاناں نے نہ صرف اوتے آئے پروٹیکشن دتی ہے پر کوئی نہیں۔ انہاں نے من لیا گڈی تھوڑی گل۔ سبوٹی بات دی بس फटाफट۔ تیرا بھی کبیر والا اسمبلی اے پر چا دیو گا۔ ਦਸ ਕਰਕੇ ਅਸਰ ਨਾਲ ਸਰ ਕੇ ਜਮੇ ਉਹਦੇ ਦੱਸਿਆ ਹੋਇਆ ਬਾਸਨਾ ਸਾਡੇ ਫਿਰ ਗੁਰੂ ਨਾਲ ਗੁਣਾਉਣਾ ਪਿਆ ਤਾਂ ਫਿਰ ਉਹ ਲਗਾਤਾਰ ਪੰਥ ਚਲਾਇਆ ਕਿੰਨੇ ਗੁਰੂ ਹੋਏ ਲਗਾਤਾਰ ਕੇ ਲੀ ਪੈਜਵੇ ਭਗਤ ਕਰਦੇ ਇਕੱਠੇ ਪੈਦਾ ਹੋ ਸਾਰੇ ਚ ਤੇ ਸਾਰੇ ਆਪ ਹੀ ਲੜ ਜੜੀ ਵੀ ਬਹੁਤ ਬੁਝਮੀ ਜੀਤੀ ਹੋਈ ਫੂਲੀ ਅਮੀ ਸੀ ਵਕਤਾਂ ਦੇ ਜਿਹੜੀ ਸੀ ਨਾ ਐ ਅੰਕਲ ਫਕੀਲ ਐ ਕੋਈ ਖੋਲਿਆ ਤੁਸੀਂ ਉਹ ਲਹਿਰ ਤਾਂ ਵੈਸੀ ਲਫਜ ਲਹਿਰਾਂ ਜਾਂ ਹਾਂ ਲਹਿਰ ਤਾਂ ਹੁੰਦੀ ਹੈ ਲਹਿਰ ਹੈ ਲਹਿਰ ਹੁੰਦੀ ਥੋੜੇ ਟਾਈਮ ਸੀ ਥੋੜੀ ਜਿਹੀ ਜਿਵੇਂ ਲਹਿਰ ਹੈ ਸਨੋਬੀ ਤਾਂ ਬਹੁਤ ਕੁਝ ਕੀਤਾ ਪਰ ਛੇਤੀ ਸ਼ਾਂਤ ਹੋ ਗਈ ਉਹਨਾਂ ਦਾ ਡੱਢਵਰ ਸੀ ਕਬੂ ਫਗੇ ਉਹ ਗੱਲ ਨਹੀਂ ਬਣਦੀ ਉਹ ਤਰੀਕਾ ਫੇਲ ਹੋਇਆ ਪਹਿਲਾਂ ਫੇਰ ਉਹ ਨੰਬਰ ਵਾਈਜ਼ ਫਾਇਦਾ ਕੀਤਾ 15 ਦੀ ਜਗ੍ਹਾ 15 ਉਹ ਪਹਿਲਾ ਕਰ ਦੋ ਨੰਬਰ ਵਾਈਜ਼ ਪਹਿਲਾਂ ਇੱਕ ਉਹ ਲੈਣਾ ਫੇਰ ਉਹਦਾ 6000 ਦਾ ਇਕੱਠੇ ਟਾਈਮ ਤੇ ਜਿੰਦੀ ਵੀ ਸਾਲ ਬਣ ਕੇ ਗੰਤੀ ਨਹੀਂ ਜਾਵੇ ਹਾਂ 200 ਸਾਲ ਸਾਲ ਉਹ ਦਸਾਂ ਪਾ ਜਾਣੇ ਪਿੱਛੋਂ ਕੋਈ ਖਾਸ ਪੰਥ ਬਣਾਤਾ ਰੈਗੂਲਰ ਚੱਲਦੀ ਰਹੇ ਸਰਾ ਨੈਟਵਰਕ ਬਣਿਆ ਫੁੱਟ ਸਾਡੇ ਕੋਲ ਜਾ ਕੇ ਨੈਟ ਨੈਟਵਰਕ ਐਥੇ ਬੜੀ ਐ ਹੀ ਨਹੀਂ ਹੈ। ਇਹ ਚੀਜ਼ਾਂ ਜੱਟ ਬਰਕ ਬਣਾਇਆ ਤੁਹਾਨੂੰ ਕੋਈ ਮਦਦ ਨਹੀਂ ਬੀਊਗਾ। ਫਿਰ ਉਹ ਦਾ ਉਹ ਬਣਾਉਂਦੇ ਨਹੀਂ ਸੀ ਕਿ ਇਹ ਬਣਾਇਆ ਤੇ ਐ ਹੋ ਜੂਗਾ। ਉਹ ਕਹਿੰਦੇ ਬਣਾਉ ਲੋ ਪਊਗਾ। ਪ੍ਰੈਕਟੀਕਲ ਲਾਈਫ ਦੇ ਵਿੱਚ ਤੁਹਾਨੂੰ ਜੀਵਨ ਜੂੰਗਾ ਦਿਖਾਉਣਾ ਪਊਗਾ। ਜਨਾਜ਼ਾ ਜੀਵਨ ਨਹੀਂ ਦਿਖਾਉਂਦੇ ਕੁਰਬਾਨੀ ਦੇ ਲੋਕਾਂ ਨਾਲ ਨਹੀਂ ਦਿਖਾਉਂਦੇ। तो ਨਹੀਂ ਬੰਨਵਾ। ਇਹ ਸ਼ੌਂਦ ਐੜੀਆਂ ਕਿਸੇ ਨੂੰ ਪੇੜ ਨੂੰ ਆ ਸ਼ੌਂਦ ਦੇਣ ਵਾਲੇ ਤੂੰ ਤੁੱਪ 'ਚ ਖੜਨਾ ਪਊਗਾ। ਜੈ ਚੱਲ ਰਹੀ ਲਾਈ ਹੋਈ ਹੈ। 76 ਇਹ ਤੋਂ ਭਜਾ ਤਾਂ ਸ਼ੌਂਦ 'ਚ ਬੈਠੇ ਨੇ ਅਸੀਂ। ਕਿ ਇਹ ਨਾਲ ਇੱਕ ਮੈਦਾਨ ਤੋਂ ਭਜਣਾ ਨਹੀਂ। ਕਿ ਸੁਪੂ ਨਹੀਂ ਕਾ ਬਹੁਤੀ ਝੂਖ ਪਤਰਾਲੀ ਹੋਈ ਹੈ। ਪਰ ਸਭਨਾਂ ਨੂੰ ਬੇਲ ਕੋਈ ਆ ਪਰਮੰਦੀ। ਸੰਗਤ ਦੇ ਵਿੱਚ ਜੀਵ ਨਾਲੇ ਬਹੁਤ ਹੋ ਗਏ ਤੇ ਸਭ ਬਹੁਤ ਹੋ ਗਈ ਪਤਰਾਲੀ। ਕਈ ਗੱਲਾਂ ਨੇ ਜਿਹੜੀਆਂ ਆ ਥੋੜੀਆਂ ਵਿਆਖਿਆ ਦੀ ਲੋੜ ਹੈ। ਜਿਹਨਾਂ ਦੀ ਵਿਆਖਿਆ ajo ਤਾਂ ਅਸੀਂ ਲੜਾਈ ਕੀਤੀ ਹੈ ਜਿਹੜੇ ਹੱਥਾਂ ਤੇ ਅਨਰਥ ਕਰਦੇ ਤੇ ਲੜਾਈ ਦਾ ਕਹਤੇ ਖੱਪੇ ਲਾਗੀ ਕਹਤੇ ਸਜੇ ਲਾਗੀ ਕੋਈ ਗਲਤ ਕੰਮ ਹੋਗੀ। ਉਹਨਾਂ ਇਗਲਾਮ ਤੋਂ ਗੱਲ करते रहे ਤਾਂ ਉਹਨਾਂ ਨੂੰ ਗਲਤ ਸ਼ਬਦ ਕਰਦੇ ਉਹ ਸੰਕਲ ਤੋਂ ਵੱਧ ਗੱਲ ਹੋਈ ਹੈ ਕਿ ਉਹ ਗਲਤ ਨਹੀਂ ਵਿਦਵਾਨ ਗੱਲ ਕਰਦੇ ਫਰਾਂਖੋਰ ਨੇ ਇਹ ਨਹੀਂ ਬੋਲ ਕੋਈ ਅਸੀਂ ਕਹਿੰਨਾ ਸਹੀ ਕੀ ਹੈ ਖਡੀਆਂ ਹੋਈਆਂ ਜਿਹੜੀਆਂ ਅਗਰ ਅਗੜੀਆਂ ਨਹੀਂ ਲੱਗੀਆਂ ਹੋਈਆਂ ਗੱਲਾਂ ਅਸੀਂ ਉਹ ਸਜਾ ਕੇ ਆਪਣੇ ਹੁਣ ਜੋ ਰੂਪ ਜਿਹਾ ਪਰ ਜਿੱਦ ਤੱਕ ਤਾਂ ਤੁਹਾਡੇ ਕੋ ਪਈ ਹੈ ਕਿ ਨੁਬਰਵਾਇ ਲਾਉਣੀ ਨੁਬਰਵਾਇ ਲਾਉਣੀ ਪੈਣੀ ਹੈ ਹਾਂਜੀ ਪ੍ਰਭ ਕੇ ਸਿਵਰਮ ਗਰਮ ਨਾ ਬਸੇ ਪ੍ਰਭ ਕੇ ਸਿਵਰਮ ਦੁੱਖ ਜਮ ਨਸੇ ਹਾਂਜੀ ਪਰ ਪ੍ਰਭ ਦਾ ਸਿਵਰ ਤਾਂ ਲੋਕ ਕਰਦੇ ਸਿਵਰ ਤਾਂ ਬਰ ਨਹੀਂ ਚੱਲਦਾ ਸੀ ਧੰਤਾ ਸਿੱਧਾ ਹੀ ਸਿਮੜਾ ਹੁਣ ਬੜਾ ਵਾਲਾਲੇ ਸਿਮੜਨੇ ਕਰਦੇ ਨੇ ਪਿਛੇ ਕਰਦੇ ਆਏ ਨੇ ਸਿਮੜਣ ਸਾਰੇ ਕਰਦੇ ਭਗਤ ਜਨਾ ਕੇ ਮਨ ਵਿਸਰਾਮ ਦੀ ਗੱਲ ਤੇ ਅੱਗੇ ਗੱਲ ਚੱਲੂ ਉਹ ਵੀ ਜੇ ਭਗਤਿਆਂ ਦਾ ਮਨ ਵਿਸਰਾਮ ਹੈ ਮਾਇਆ ਦੇ ਵਿੱਚ ਮਨ ਵਿਸਰਾਮ ਕਰੇ ਨਹੀਂ ਸਕਦਾ ਮੱਛੀ ਪਾਲੀ ਦੇ ਬਾਅਦ ਜਾ ਕੇ ਵਿਸ਼ਰਾਮ ਕਰੂੰਗੀ ਤੜ੍ਹੂੰ ਮੱਛੀ ਪਾਲੀ ਦੇ ਬਾਅਦ ਕਰਦੇ ਵਿਸ਼ਰਾਮ ਕਰੂੰ ਠੀਕ ਕਰੂੰ ਤੜ੍ਹੂੰ ਚੇਤਾਵਨੀ ਫਰ ਕਰ ਅਗਰ ਤੁਸੀਂ ਅੱਜ ਮੱਛੀ ਨੂੰ ਵਿਸ਼ਰਾਮ ਕਰੋਗੇ ਪਟਾਲ ਦੇ ਬਾਅਦ ਮੱਛੀ ਨੂੰ ਪਾਲੀ ਚੋਂ ਕੱਢ ਕੇ ਉਹ ਜੀ ਬਿਸਰਾਮ ਕਰੂ 1% ਇਹ ਸਮਾਹਤਾ ਹੱਸੇ ਐਸਾ ਹੀ ਆ ਭਗਸਾ ਸਾਧ ਜੀ ਬਿਸਰਾਮ ਨਹੀਂ ਕੋਈ ਕਰ ਸਕਦਾ ਮਾਨ ਇਹਦੀ ਮੌਤ ਹੈ ਭਗਸਾ ਸਾਧਰ ਤੇ ਵੀ ਮੌਤ ਹੈ ਉਹਨੂੰ ਪਤਾ ਹੈ ਮਰਦਾਂ ਇਹਦੇ ਵਿੱਚ ਹੀ ਗਿਆ ਜਿੰਨਾ ਇਹਨੂੰ ਛੱਡ ਗਿਆ ਇਹਦੀ ਮੌਤ ਹੋਈ ਨਹੀਂ ਕਰਦਾ ਮਰ ਤੋਆ ਹੋਰ ਕਿਸੇ ਕਰਦਾ ਮਰ ਤੋਆ ਇਹ ਪਤਾ ਨਹੀਂ ਕਿ ਮਰਨ ਤੋਂ ਬਚਾ ਕੇ ਵੀ ਬਸ ਆ ਗਏ ਅਰਹਤ ਜੀ ਜਿੱਦਾਂ ਬਚਾ ਆ ਗਿਆ ਸਾਨੂੰ ਸਾਡਾ ਕਿਲਾ ਬਣ ਗਿਆ ਡਿਫੈਂਸ ਬਣ ਗਿਆ ਪੂਰਾ ਦੁਸ਼ਮਣ ਬਾਹਰ ਆ ਜਨਾਂ ਜਦ ਸਾਡੇ ਕੋਲ ਹਥਿਆਰ ਨਹੀਂ ਹੈਗੇ ਸਾਡੇ ਕੋਲ ਕਿਲਾ ਨਹੀਂ ਡਿਫੈਂਸ ਨਹੀਂ ਸਭੀ ਚਿੰਤਾ ਹੁੰਦੀ ਚ ਸਾਡੇ ਜੀਵਨ ਨੂੰ ਚੱਟੈ ਸਾਡੇ ਜੀਵਨ ਨੂੰ ਗੁਰੇ ਜਦੋਂ ਇਹਨੂੰ ਡਿਫੈਂਸ ਮਿਲ ਗਿਆ ਔੜ ਮਿਲ ਗਈ ਨਾ ਉਹਦੀ ਤੇ ਰੰਗ ਜਾਂਚ ਜੀ ਉਹ ਜੀਤਾਂ ਉਹ ਰਮਾਦਾਈ ਪਰ ਆਮ ਪਬਲਿਕ ਦੇ ਬਦਲ ਕੇ ਗੱਲ ਨਹੀਂ ਆਈ ਕਿਉਂ ਸਾਡੇ ਨਗਾ ਜਮਨਣਾ ਸਰੀਰ ਸਰ ਮਰਨਾ ਸਰੀਰ ਸਰ ਦੁਨੀਆ ਦੀ ਨਿਗਾਹ ਨਾਲ ਜਿਹੜਾ ਸਰੀਰ ਨਾਲ ਹੁਣੀ ਮੰਦਾ ਤਕਵੀਰ ਹੈ ਜਾ ਕੇ ਚਲੇ ਆ ਗੱਲ ਇਦਾਂ ਜੇ ਇਹ ਗੱਲ ਤਾਂ ਹੀ ਕਹ ਕੇ ਚਲਿਆ ਇਹ ਸਮਝ ਜਾਏਗਾ ਚੌੜੇ ਮਾਰਗ ਲਾਇ ਫੁਰਸਤ ਨੂੰ ਪਤਾ ਲੱਗੂ ਕਿ ਮੇਰ ਕੀ ਕਹਿਣਾ ਕਿਉਂ ਕਹਿੰਦਾ ਸੀ ਸਿੱਧ ਕਹਿੰਦੇ ਤੇ ਇਥੋਂ ਚੱਕ ਕੇ ਤੁਹਾਨੂੰ ਉਹ ਪੁਲਿਸ ਲੈ ਜਾਂਗੇ ਜਿੱਥੇ ਬਸਦਾ ਹੀ ਨਹੀਂ ਉੱਪਰ ਹੋ ਜਾਂਦਾ ਸਿੱਧੇ ਵਿਚਾਲੇ ਦੁਨੀਆਂ ਕਹਿੰਦੇ ਨੇ ਪੜ੍ਹ ਕੇ ਦੇਖ ਲੋ ਉਹਨਾਂ ਦੇ ਦਰਾਂਸ ਉਹ ਵਿਚਾਰੇ ਕਿ ਦੁਨੀਆ ਉਤੇ ਸਿੱਧ ਰਹਿੰਦੇ ਨੇ ਉਮਰ ਸੇ ਹੀ ਵੀ ਸਿੱਧ ਮੰਡਲੀ ਜਿसे ਕਹਿੰਦੇ ਸਿੱਧ ਮੰਡਲੀ ਜਿसे ਕਹਿੰਦੇ ਇਹ ਜੂੜਾ ਉਹ ਸੁਰਗ ਦੀ ਨੂੰ ਕਹਿੰਦੇ ਨੇ ਸੁਰਗ ਕਹਿੰਦੇ ਦੇਵਤਾਂ ਨੂੰ ਸੁਰਗ ਕਹਿੰਦੇ ਨੇ ਉਹ ਸਿੱਧ ਬੁੱਧ ਲਈ ਕਹਿੰਦੇ ਨੇ ਉਹ ਗੱਲ ਸੀ ਮਰਦਾ ਤੁਸੀਂ ਇੱਥੇ ਗਏ ਮਰਦਾ ਹੋ ਰਹੇ ਗਏ ਨਾ ਨੇ ਸੰਸਕਾਰ ਵੀ ਕਰਦਾ ਆ ਦੱਬਤਾ ਸਰੀਰ ਨੂੰ ਫਿਰ ਤੂੰ ਕਾ ਨਾ ਬਾਹ ਫੜ ਕੇ ਲੈ ਜੂ ਤਰੀ ਤੂੰ ਬਾਹ ਹੱਥ ਨਾਲ ਲਗੇ ਨਹੀਂ ਕਹ ਜੀ ਨਾ ਫੜ ਨਾ ਉਹਦੇ ਕੋ ਬਾਹ ਹੋਣੀ ਆ ਨਾ ਤੇਰੇ ਕੋ ਪੱਜਾ ਹੋਵੇ ਫਿਰ ਕਿਵੇਂ ਬਾਹ ਫੜੀ ਜੀ ਕਿਹੜੀ ਬਾਹ ਹੈ ਕਿਹੜੀ ਬਾਹ ਕਿਹੜਾ ਹੱਥ ਹੈ ਜੜ ਪੜੂਗਾ ਇਸ ਸਵਾਲ ਦਾ ਜੀ ਤਾਹੀ ਮੈਂ ਇਹਨਾਂ ਨੂੰ ਲੱਭ ਉਹ ਬਾਹ ਦਾ ਦਰਸ਼ਨ ਕਰੋ ਮੈਨੂੰ ਜਿਹੜੀ ਇਹ ਨਹੀਂ ਸੁਣੀ ਉਹ ਲੈ ਕਹਿਣਾ ਹੁੰਦਾ ਜਿਹੜੀ ਪਦੀ ਹੋਈ ਵਾਣੀ ਕੱਚੀ ਵਾਣੀ ਕਹਿਣਾ ਨਹੀਂ ਹੁੰਦਾ ਪੜ੍ਹਦਾ ਨਾ ਮੈਂ ਕਹਿੰਦਾ ਪੜ੍ਹਦਾ ਜਿਹੜੀ ਪਦੀ ਹੋਈ ਵਾਣੀ ਯਾਰ ਕੱਚੀ ਵਾਣੀ ਜਿਹੜੀ ਉਹਦੀ ਮੈਂ ਹਰ ਨੂੰ ਗਿਆ ਸੀ ਫਿਰ ਚੁੱਪ ਬੋਲਦੀ ਰਹੋਗੀ ਉਹ ਸਭ ਪੁੱਛ ਕੇ ਦੱਸਦੀ ਪੁੱਛ ਲਈ ਤਾਂ ਸਾਦੀ ਕੁਝ ਥੀਂ ਕਿਛੇ ਉਹ ਕੋਈ ਛੱਗੀ ਵਾਰੀ ਦੀ ਲੋਕਾਂ ਨੂੰ ਗੁਰਸਾਂਦ ਗੋਲ ਸੀ ਲੋਕੋ ਜੋ ਰਾਮ ਗੋਲ ਸੀ ਜਵਾਬ ਵਿੱਚ ਇਹ ਗੱਲ ਆਈ ਜੀ ਸੁਬੇਰ ਕਹਿੰਦਾ ਹੈ ਤੰਪਿਆਏ ਕੋ ਰੋਪਣੇ ਲਾਏ ਇੱਥੇ ਕੀ ਹੈ ਕਹਿੰਦੇ ਸੇਵਣ ਭਾਵੇਂ ਕਰਦੇ ਨੇ ਲੋਕ ਕਿਹੜਾ ਪੁੱਛੀ ਜਵਾਬ ਤਾਂ ਵਾਲਾ ਹੈ ਜੇ ਕੋਈ ਪ੍ਰਭ ਦਾ ਸਿਮਰਨ ਕਰੂਗਾ ਇਹਦੇ ਨਾਲ ਕੋਈ ਡਰ ਨਹੀਂ ਆਹ ਸਾਈਡ ਤੇ ਗਾਉਣਾ ਅੱਛਾ ਗਾਣਾ ਕਿਉਂ ਲੈ ਚੱਕੀ ਆ ਪਰ ਇਹਦੇ ਜਿਹੀ ਅੱਛਾ ਤੇਰੀ ਤਾਂ ਯੂ ਵੀ ਸ਼ਰਮ ਦਾ ਸਿਮਰਨ ਕਰਦੇ ਸੀ ਸਾਧੂ ਸੀ ਸਭ ਕੋ ਸੀ ਕਰਨੀ ਸੀਗਾ ਪਿੱਛੇ ਠੀਕ ਹੈ ਜੀ અને ਨੇ પ્રાણી ਮੁબદલે બધું છે ફળ જલਦਾ સી કે કબીર ભી હોયા પહેલા ફળ દોય સિમણ ਵੀ લોગ હડ્ડ ભી કરદે કે સંત કરદે જી સિમણ સારે કરદે ઓનાને તો શરત વાસ્તી કે જેડા પ્રભુ કા સ્મરણ આલા દુનિયા ઓગર ગર્ભ وچ નહિ વાદો ગર્ભ કે સ્વારે સિમણ તો કરભું નહિ કે કરભે તો સ્મરણ નહિ હોંદાઈ થી જાડું પાને પેડ જો ઉતે તો સિમણ હોતાઈ નહિ सिमन उल्टा बाहर करता है ये गर्बला हुया राम गरो दा एदा मतलब है आ जेड़ा राम गरबा ने सारा इतनी वजात मां करके हो ओ बाहर भी बसदा दरवाजा अपने घर ले ਅ ਗਰਭ ਬਾਹਰ ਹੈ ਨੰਤ ਬਾਹਰ ਹੈ ਸਾਰਾ ਗਰਭ ਬਾਹਰ ਹੈ ਮਾਇਆ ਜਿਹੜੀ ਹੈ ਸਭ ਬਾਹਰ ਭਾਸਾਗਰ ਗਰਭ ਹੈ ਭਾਸਾਗਰ ਗਰਭ ਹੈ ਬਾਹਰ ਹੈ ਟਿਕੜੂ ਇਹ ਜਿਹੜੇ ਦਰਵਾਜੇ ਦਿੱਤੇ ਨੇ ਦਵਾਰ ਇਹ ਗਰਭ ਨਾਲ ਜੋੜ ਰਵਾਸ ਨਹੀਂ ਤੇ ਬਾਹਰ ਉਹ ਗਰਭ ਚ ਨਹੀਂ ਆਮ ਗਰਭ ਚ ਨਹੀਂ ਬਸਦਾ ਜਦ ਰਾਮ ਗਰਭ ਤੇ ਦੀ ਵਾਧਾ ਆ શરીર ਵੀ ਛੱਡਦਾ ਆ ਵੀ ਛੱਡਿਆ ਹੈ ਅਗਲਾ ਵੀ ਮਿਲਣਾ ਜਿੰਨਾ ਜੇ ਰਾਮ ਗਰਭ ਦੇ ਵਿੱਚ ਆ ਜਦ ਮਰ ਕੇ ਜਾਂਦਾ ਹੈ ਇਥੋਂ ਜਦ ਵੀ ਰਾਮ ਗਰਭ ਦੇ ਵਿੱਚ ਹੀ ਹੁੰਦਾ ਹੈ ਲੋਕ ਨੇ ਰਾਮ ਗਰਭ ਦੇ ਵਿੱਚ ਇੱਕ ਤਾਂ ਜਿਹੜੀ ਆਤਮਾ ਨਿਕਲ ਜਾਂਦੀ ਉਹ ਵੀ ਰਾਮ ਗਰਭ ਤੇ ਰਹਿੰਦੀ ਹੈ ਦੇਵ ਲੋਕ ਹੈ ਜਿਹੜਾ ਰਾਮ ਗਰਭ ਦੇ ਜੇ ਤੋ ਆਤਮਾ ਦੁਆਰਾ ਜਨਮ ਲੈਂਦੀ ਹੈ ਫਕਾਸ਼ ਲੋਕ ਹੈ ਉਹ ਜਿਹਨੂੰ ਦੇਵ ਲੋਕ ਅਸੀਂ ਕਹਿੰਦੇ ਉਹ ਵੀ ਰਾਮਗਰ ਵਿੱਚ है? ਕਿਹੜਾ ਇੱਕ ਮਾਤਗਰਵ ਹੈ ਕਿਹ ਕਿਹ है? ਹੈ ਤੇ ਮਾਤਗਰਵ ਹੈ ਮਾਤਗਰਵ ਉਹ ਕਿਹ ਅਸੀਂ ਇੰਤਾਲ ਦਗਾ ਇੱਕ ਆਹ ਹੈ ਇਹ ਵੀ ਰਾਮਗਰਵ ਹੈ ਇਹਦੇ ਮਾਰਨ ਲਖਾਇ ਬੁੱਢਲ ਆਏ ਮਾਰਨ ਲਖਾਇ ਬੁੱਢਲ ਮੇ ਆਏ ਜੀਵਨ ਸਾਥੀ ਭਾਈ ਜੇ ਜੀਵਨ ਸਾਥ ਜੀਵਨ ਸਾਥ ਨਾ ਫੇਰ ਆ ਮਾਂ ਚਾਹੀਦੀ ਹੈ ਫੇਰ ਅਗ ਮਾਤਾ ਚਾਹੀਦੀ ਹੈ ਸੇ ਚੰਡੀ ਦੀ ਲੋੜ ਹੈ ਫਰ ਬੁੱਧੀ ਦੀ ਲੋੜ ਗੱਲ ਪਿਛਲੀ ਹੋਈ ਹੈ ਕਹੀ ਹੋਈ ਉਹ ਕਹਿੰਦਾ ਸ੍ਰਵ ਕਾ ਸਮਰਣਾ ਗਰਬ ਦਰਬ ਜੇ ਪ੍ਰਭ ਦਾ ਸਿਮਰਨ ਹੋ ਜਵੇ ਕੋਈ ਚੱਲਵੇਂ ਗੱਲ ਵੀ ਤਾਂ ਤੇ ਲੋਕ ਦੀ ਬਾਹਰ ਹੁੰਦਾ ਉਸਾਂ ਨੂੰ ਲੋਕ ਦੀ ਗੱਲ ਵੀ ਚੱਲ ਛੁੱਟੀ ਕਰ ਜੀਵਤ ਆਇਓ ਮਰੀਏ ਮਰੀਏ ਇਹ ਜੀਵਨ ਮੁਕਤ ਅਵਸਥਾ ਦੀ ਗੱਲ ਹੈ ਸ਼ਰਮਣ ਸ਼ਰਮਣ ਜੀਵਨ ਮੁਕਤ ਅਵਸਥਾ ਬਸਤੇ ਨਹੀਂ ਕਰਨਾ ਸਿਮਰਨ ਹੈ ਜੀਵਨ ਮੁਕਤ ਅਵਸਥਾ ਦੀ ਹੀ ਗੱਲ ਸ਼ਰਮਣ ਉਦੋਂ ਯਾਦ ਆ ਜੇ ਜੀਵਨ ਮੁਕਤ ਹੋ ਜਵੇ ਉਹ ਤੇ ਪਹਿਲਾਂ ਜਾਪ ਔਰ ਹੈ ਉਹ ਤੇ ਪਹਿਲਾ ਹੁੰਦਾ ਜਾਪਾ ਔਰ ਤਾਪਾ ਹੈ ਜਾਪ ਔਰ ਤਪ ਤੇਨ ਲੋਕ ਤੇ ਬਾਹਰ ਕੱਢ ਹੁੰਦਾ ਤਪ ਕੱਢ ਹੁੰਦਾ ਹੈ ਲੋਕ ਤੇ ਬਾਹਰ ਔਰ ਜੇ ਤਾਪ ਬੰਦ ਬੰਦ ਲੈ ਲਏ ਸਹੀ ਜੇ ਬੰਦੂ ਬਣਾ ਲਵੇ ਮੰਨੂ ਬੜੋਈ ਤਾਪਾ ਜੇ ਮਨ ਮੰਨ ਜਵੇ ਜੇ ਮਨ ਮੰਨ ਜਵੇ ਬਰਨ ਸਦਾ ਨੂੰ ਛੱਡਣਾ ਸੰਸਾਰ ਦਾ ਬੋਤਿਆ ਕੜਾ ਫੇਰ ਤੇ ਲੋਕ ਤੇ ਬਾਹਰ ਜਾਂਦਾ ਜਨਾ ਕਿ ਬੋਦੀ ਬੰਦਾ ਜਾਏ ਨਹੀਂ ਸਕਦਾ ਬਨੂ ਨੇ ਜਾਣੋ ਘਰੇ ਹੁੰਦਾ ਦਾਦਾ ਸਾਰੀ ਜਾਇਦਾਦ ਦਾ ਮਾਲਕ ਉਹਨਾਂ ਨੂੰ ਲੋਤੀ ਛੜਦਾ ਰਾਜ ਅਜਾ ਰੋਟੀ ਖਾਣੀ ਉਹ ਰਾਜ ਦਾ ਮਾਲਕ ਹੁੰਦਾ ਹੋਇਆ ਬਿਮਾਰ ਤੇ ਨਹੀਂ ਹੈਗਾ ਮਨੋ ਤੇ ਆਖਦਾ ਮਨੋ ਤੇ ਫਿਰ ਮਾਲਕੀ ਹੈ ਨਹੀਂ ਜਿ ਬਨੂ ਨੇ ਦੇ ਦਿੱਤੀ ਇਹ ਸਿਰਫ ਬੰਦਸੇ ਸਦਨ ਸਬਾਹ ਕਾਲ ਸਮਝੋ ਨੇ ਦਿਖਾਵੇ ਖਾਤਰ ਮਾਇਆ ਤਿਆਗੀ ਉਹਨੇ ਤਿਆਗ ਹੀ ਹੋਈ ਜਿਨ੍ਹਾਂ ਨੇ ਬੰਦੂ ਤਿਆਗੇ ਉਹੀ ਤਿਆਗ ਸਕੇ ਜੀ ਜਿਹਨੇ ਕਿਸੇ ਨੂੰ ਮਨੋ ਤਿਆਗਤਾ ਹੋ ਤੇ ਖਤਰੋ ਮਰ ਗਿਆ ਤੋ ਉਹ ਜਿਸ ਮਨੋਕਸਾਰੇ ਇਹ ਜੋ ਉਹ ਰੋਗ ਦਾ ਸੰਤੁਲਨ ਕਰੇ ਉਹਨਾਂ ਦਾ ਸਾਧਨਾ ਵਾਲੀ ਗੱਲ ਨਾ ਕੇ ਵਿਸਾਲਨ ਦਾ ਦਿਖਾਵਾ ਕਰਨੀ ਚਾਹੀਦਾ ਸਿਮਨ ਦਿਖਾਵੇ ਦੀ ਗੱਲ ਨਹੀਂ ਹੈ ਸਿਰਫ ਆਪਣੀ ਲੋੜ ਨੂੰ ਕਰਨ ਦਿਖਾਵੇ ਖਾਤਰ ਅਸੀਂ ਉਹ ਨਹੀਂ ਹਲਾਉਣਾ ਵੀ ਅਸੀਂ ਰੋਟੀ ਖਾਂਦੇ ਆ ਆਪਣੀ ਲੋੜ ਨੂੰ ਖਾਣੀ ਹੈ ਰੋਟੀ ਇਹ ਲੋ ਦੁਆ ਗਾਨੀਏ ਦੂਹ ਦੂਦੋਂ ਰੋਂ ਰੱਤਰ ਗਾਨੀਏ ਦੂਏ ਤਾ ਦੱਸ ਕੋ ਭੋਜਨ ਭਜਨ ਜੈਨਾ ਆਰ ਨੂੰ ਪੜਦੇ ਚ ਕਿਹਾ ਪੜਦੇ ਚ ਕਿਹਾ ਦਿਖਾਉਣ ਦੇ خاطر ਕਿਹਾ ਪੜਦੇ ਚ ਕਿਹਾ ਤੁਸੀਂ ਰੁਕੀ ਖਾਓ ਚੋਪੜੀ ਹੋਈ ਖਾਓ ਜੈ ਜੀ ਮਰਜੀ ਖਾਓ ਖਾਣਾ ਮੁੱਢ ਭੌਂਦਾ ਹੁੰਦਾ ਖਬਰ ਤਨ ਮੰਨੂ ਵੈਜਾ ਜਟਾਉ ਨੂੰ ਦੂਵੇ ਨੂੰ ਕਹਿ ਦੇਣੀ ਹਾਲੇ ਇਹ ਕਰਕੇ ਇਹ ਭਗਤੀ ਇਹ ਚੀਜ਼ਾਂ ਦਿਖਾਵੇ ਮਸਤ ਜੀ ਪਰ ਸੰਸਾਰ ਤੇ ਦਿਖਾਵਾ ਜਿਹੜਾ ਹੈਗਾ ਇਹ ਪ੍ਰਧਾਨ ਦਿਖਾਵਾ ਪ੍ਰਧਾਨ ਰਬਕੇ ਸ਼ਿਵਰ ਨੂੰ ਗਰਮਨਾ ਬਸਾ ਪ੍ਰਬਕੇ ਸ਼ਿਵਰ ਨੂੰ ਦੁੱਖ ਜਮ ਦੱਸ ਕਿਉਂ प्राबदे से मन नाल जेड़ा दुख है गर्व दा दुख है जम के या गर्व में गर्व दा फड़या है गर्व में आत्मा ने हुई है गर्व दे फड़या है सानू कुछ नहीं है जाम दे में होता है गर्व जब ओ गर्व दा जाल है जो फसया हुआ है के गर्व दा जान टूट गया चल छुटा ले जाल में गया जे जाल टूट गया आजाद हो गया ਭਰਮ ਜਾਲ ਚ ਫਸਾਏ ਹੋਏ ਕਿਉਂਕਿ ਛੇਵਾ ਭਰਵੇਂ ਭਰਮੇ ਭੂਲਾ ਨਿਰਦੇਸ ਹੋਏ ਭਰਮ ਦੇ ਜਾਲ ਚ ਫਸਿਆ ਵਿੱਚ ਹਰੀ ਜਾਲ ਉਹ ਰਾਮ ਗਰਮਾ ਭਰਮ ਦਾ ਜਾਲ ਹੈ ਹੋਰ ਕੁਝ ਨਹੀਂ ਹੈ ਰਾਮ ਗਰਮੂ ਵੀ ਭਰਮ ਦੇ ਜਾਲ ਨੂੰ ਕਹਿੰਦੇ ਨੇ ਭਰਮ ਦੇ ਜਾਲ ਦਾ ਅਸਲ ਹੈ ਰਾਮ ਗਰਮ ਜਦ ਭਰਮ ਦਾ ਨਾਸ ਹੋਇਆ ਰਾਮ ਉਹ ਜਾਲ ਖਤ ਜਲ ਗਿਆ ਜਾਲ ਖਤਮ ਹੋ ਗਿਆ ਬਹੁਤ ਜ਼ਬਰਦਸਤ ਜ਼ਬਰਦਸਤ ਆਇਆ ਨਾ ਜਾ ਜਾਗ ਪਿਆ ਜਾਗੇ ਤੇ ਬਾਅਦ ਸਬੂਤ ਚੁਬੇ ਹੋ ਜੂ ਅਜੇ ਦੋ ਅੰਗਲ ਤੱਕ ਕਰਦੇ ਆਪਸ ਹੋ ਗਏ ਕੋਈ ਕੰਮ ਕਰਦੇ ਸੀ ਕਿਤੇ ਜਾਣਾ ਸੀ ਭੁੱਲ ਜਾਂਦੇ ਆ ਨਾ ਬਿਲਕੁਲ ਸੌ ਕੇ ਭੁੱਲ ਜਾਂਦੇ ਸਭ ਕੁਝ ਭੁੱਲ ਜਾਂਦੇ ਜਾਗਦੇ ਜਦ ਹੀ ਆਉ ਸਮਾਂ ਨਾ ਆਉਂਦਾ ਫਿਰ ਜਾਂਦਾ ਦਲੀਆਉਂਦਾ ਵੀ ਕੀ ਕਰਦੇ ਸੀ ਕਿੱਥੇ ਜਾਣਾ ਅੱਜ देर तक ਨਹੀਂ ਉੱਠੇ ਅਗਲਾ ਪ੍ਰੋਗਰਾਮ ਕੀ ਹੈ ਫਿਰ ਆ ਜਾਂਦਾ ਕੱਲ ਦਾ ਵੀ ਪਤਾ ਲੱਗ ਜਾਂਦਾ ਅੱਜ ਦਾ ਵੀ ਪਤਾ ਲੱਗ ਜਾਂਦਾ ਪਿਛਲਾ ਪਿਛਲਾ ਭੁੱਲਿਆ ਐ ਇਹ ਜੀਵਨ ਦਾ ਯਾਰ ਹੈ। ਉਹ ਪਿਛਲਾ ਉਹਦੇ ਨਾਲ ਇਹ ਦੀ ਸਾਡਾ ਲੇਖਾ ਜੋਖਾ ਆ ਕਰੋੜਾਂ ਸਾਲਾਂ ਦਾ ਪਿੱਛੇ ਚੱਲਦਾ। ਐਸਾ ਸਾਡਾ ਲੇਖਾ ਜੋਖਾ ਤਾਂ ਹੀ ਆਊਗਾ ਜੇ ਪਿਛਲੇ ਦਿਨਾਂ ਅਟੈਚ ਹੋਊਗੇ। ਸਾਡੇ ਕੋਲ ਕੀ ਹੈ ਲੇਖੇ ਜੋਖੇ? ਬੁੱਧ। ਜਿਹਦੇ ਕਮਾ ਕੇ ਲੈਂਦੀ ਆ, ਗਲ ਕਮਾ ਕੇ ਲੈਂਦੀ ਆ ਵਿੱਚ। ਉਹ ਕੁਛ ਨਹੀਂ ਹੈ ਸਾਡੇ ਕੋਲ। ਅਕਲ ਦੇ ਬਿਨਾਂ ਕੋਈ ਕਮਾਈ ਨਹੀਂ ਹਿਸਾਬ ਜਿੱਤੇ ਜਦੋਂ ਬੁੱਧ ਆਉਦੀ ਉਹ ਜਦ ਤੇ ਬੁੱਧ ਆਉਦੀ ਜਿੱਦੀ ਬੁੱਧ ਆਉਦੀ ਉਹ ਕਮਾਈ ਹੈ ਸਾਡੇ ਵਾਲੇ ਜੇ ਹੁਣ ਪੋਜ਼ਿਟਿਵ ਬੁੱਧ ਦੇਰ ਬੁੱਧ ਜਿੱਦੀ ਇਹਦੀ ਕਮਾਈ ਗੱਲਾਂਗੇ ਨਾ ਆ ਜਿਹੜਾ ਫਰੇਵ ਕਰਨਾ ਕਿਸੇ ਨਾਲ ਸੋਚਣਾ ਬੁਰਾ ਸੋਚਣਾ ਕਿਸੇ ਦਾ ਆ ਬੇਰਾਆ ਬੇਰਾਨੀ ਆਪਣਾ ਪਰਾਇਆ ਬੁੱਧ ਚ ਰਖਣਾ ਇਹ ਜੇ ਤਿਆਗ ਤਾਂਗੇ ਜੇ ਬੁੱਧ ਲੋਗ ਨੂੰ ਜਿੰਨਾ ਜਰੇ ਨਹੀਂ ਤਿਆਗਦੇ ਬੁੱਧ ਨੂੰ ਨਹੀਂ ਜੇ ਬੁੱਧ ਪਰਮੇਸ਼ਰ ਦੀ ਹੈ ਜੇ ਬੁੱਧ ਪਰਮੇਸ਼ਰ ਦੀ ਉਹ ਹੀ ਜਾਈ ਗਈ ਤਾਂ ਆਪਣੇ ਜਿਹੜਾ ਉਹ ਵੀ ਟੀਮ ਘਰ ਹੈ ਉਹਦਾ ਦੇਸ਼ ਹੈ ਉਹਦਾ ਮੈਂਬਰਸ਼ਿਪ ਦਿੰਦਾ ਨਹੀਂ ਦਿੰਦੇ ਹੀ ਉਹਨਾਂ ਦੀ ਸ਼ਰਤਾਂ ਨਹੀਂ ਮਰਬਾਨੀ ਕੇ ਅਜੰਤੀ ਕੋਰ ਬਾਨੀ ਹੋ ਤੇਰਾ ਇਬਦਾਨ ਹੈ ਸੱਚਖੰਦ ਦਾ ਸਮਰਾਨ ਹੈ ਐਦਾ ਹੋ ਜੋ ਤਉਥੇ ਜੀ ਹੋ ਜੂ ਉਹ ਨਹੀਂ ਜਮਾ ਨਾ ਕਾਲੇ ਪਾਣੀ ਜੁਵੇ ਦੇ ਚ ਅਧਿਕ ਕਾਲੇ ਪਾਣੀ ਛੱਡਿਓ ਜੀ ਭਾਈ ਇੱਥੇ ਸਾਡੇ ਦੇ ਚ ਜੀ ਤੁਸੀਂ ਸਾਡੇ ਖਾਣੇ ਨਹੀਂ ਆ ਸਕਦੇ ਝੂਠ ਖਾਣ ਦੇ ਰਹੋ ਜਿਹੜੇ ਕੂੜਿਆ ਦੇ ਨੇ ਝੂਠ ਛੱਡ ਜਾਨੇ ਜੀ ਇਹ ਸੱਚਾਰੇ ਬੜੀ ਜੀ ਉਸੇਟ ਨਹੀਂ ਹੋ ਜਾਂਦੀ ਇਹ ਸਾਡੇ ਬੰਦੇ ਕਿ ਮੈਂ ਹੁਣ ਆ ਉਹ ਆ ਦੱਸਿਆ ਸਾਡੇ ਕੋਲ ਕਿ ਮੈਂ ਹੁਣ ਆ ਉਹ ਦੱਸਿਆ ਹੈ ਜਿਹੜਾ ਹੁਣਾ ਹੋ ਜੋ ਜਿਹਨੇ ਨਹੀਂ ਹੁਣ ਦੋ ਹੌਲਾ ਇਹੇ ਦੱਸੋ ਕੀ ਭਲਾ ਨਬੀ ਚੋੜੀ ਗੱਲ ਹੈ ਕਿਸੇ ਨਾਲ ਕੀ ਲੜਾਈ ਹੈ ਕਿਸੇ ਦੀ ਫਿਰ ਧਰਮ ਨੂੰ ਅਸੀਂ ਤਾਂ ਬਣਾ ਕੇ ਧਰਮ ਨੂੰ ਮਿਸ਼ਰਤ ਕਰਦੇ ਆ ਪਾਰਟੀਆਂ ਬਣਾ ਕੇ ਇਹਦੇ ਸਿੱਤੇ ਰਾਜ ਲੈਦੇ ਆ ਹੋਣ ਉਦੋਂ ਗੱਲ ਬੜਪੜ ਸੁੱਚੀ ਇੱਥੇ ਰੁਡੀ ਬਖਾ ਗਾੜੀ ਨਾਲ ਕਦੀ ਕੋਈ ਝਗੜਾਈ ਨਹੀਂ ਵੜਿਆ ਕਦੇ सगळा ਇਹਦੇ ਨਾਲ ਬਾਇਰ ਨੂੰ ਡਰਜ ਕਰ ਰਿਹਾ ਸੀ ਇਹ ਬਾਇਰ ਨੂੰ ਜਬੇ ਝਗੜਾ ਹੁੰਦਾ ਹੈ ਬਾਇਰ ਨੂੰ ਜਬੇ ਜਬੇ ਘਟਾ ਹੁੰਦਾ ਜੋੜੇ ਬਾਇਰ ਲਈ ਜਿੱਦ ਵੀ ਨੇ ਸਭ ਤੇ ਉੱਤੇ ਬਾਇਰ ਦਾ ਅਰਬਾਂ ਖਰਬਾਂ ਪਈ ਲੱਗੇ ਹੋਏ ਨੇ ਵੀ ਦੋ ਤਾਰੀਏ ਨੇ ਉਹੀ ਅਸੀਂ ਦੇਖਦੇ ਹਾਂ ਉਹੀ ਉਹ ਦੀ ਕੀਮਤ ਕਹਿੰਦੇ ਉਹ ਵੀ タル ਦੀ ਕੀਮਤ ਕਹਿੰਦੇ ਇਹ ਗਲਤ ਹੈ ਟ੍ਰੈਂਡ ਹੈ ਸਾਡਾ ਸੋਚੇ ਗਲਤ ਹੈ ਕਿਉਂਕਿ ਉਹ ਚੀਜ਼ ਦੀ ਕੀਮਤ ਪਾਣੀ ਚਾਹੀਦੀ ਹੈ ਇਮਾਨਦਾਰੀ ਦੀ ਕੀਮਤ ਹੈ ਨਹੀਂ ਇਸ ਕਰਕੇ ਬਹੁਤ ਗਰੀਬ ਲੋਕ ਅੱਜ ਜਾਂਦੇ ਨੇ ਕੋਈ ਦੇਖਿਆ ਮਾਨਸਰ ਆਦਮੀ ਤੇ मतलब ਰਾਸ਼ਪਤੀ ਪਵੰਦ ਦੇ ਵਿੱਚ ਇੱਕ ਪ੍ਰਸਤਾਵੰਦੰਦਾ ਹੋਵੇ ਸਭ ਤੇ ਬੋਲਦਾ ਰਹੇ ਸਭ ਤੋਂ ਗਿਆਨਵਾਨ ਆਦਮੀ ਆਦੀ ਹੈ ਫਤਿਹ ਦੇ ਮਸਲ ਉਹਨੂੰ ਮਤਲਬ ਇਹ ਚੇਲੇ ਕਦੂਟ ਵੋਟਾਂ ਨਹੀਂ دیਏ ਇਹ ਆਪੇ ਸਭਾ ਦੇ ਕੋਈ ਟਾਲਰ ਵੀ ਸਾਡੇ ਮੇ ਬਿਲਣ ਜਾਈਦਾ ਉਹ ਮਿਲਣ ਇਹ ਇਹ ਜੀ ਨਹੀਂ ਨਾਲ ਚਲਾ ਪਰਿਣਾ ਨਦਰ ਨਦਰ ਨਹੀਂ ਇਹ ਪੁਰਸਕਾਰ ਇਹ ਤਾਂ ਉਹ ਜਿਹੜੇ ਪੁਰਸਕਾਰ ਨੇ ਉਹਨੂੰ ਦਾ ਗੁਰਵਾਨੀ ਕਹਿੰਦੇ ਕੋਲ ਨਾਲ ਦਿੰਦੇ ਦੇ ਵਲੇ ਨਲਜੇ ਇਹ ਪੁਰਸਕਾਰ ਦੇਣ ਵਾਲੇ ਇਹ ਲੈਣ ਵਾਲੇ ਨਲਜ ਨੇ ਵੇਸ਼ਰਮ ਦੇ ਜੂਆ ਖੱਡਣਾ ਬਾਬੇ ਇੱਥੇ ਕਲ ਬੰਦ ਰਿਛਾ ਜੀ ਜੂਆ ਦਾ ਪਹਿਲਾਂ ਹੀ ਵੱਡਾ ਖੱਡ ਛੋਟੀ ਹੈ ਜੂਆ ਖੱਡ ਜਿ ਬੜੇ ਨਹੀਂ ਸਕਦਾ ਇਹ ਕਿਛਾ ਜੋ ਵੰਡੇ ਉਹਨੂੰ ਪੁਰਸਕਾਰ ਦਾ ਜੀ ਦੇ ਤੁਹਾਨੂੰ ਉਹ ਜੂਹੇ ਵਾਲੇ ਫੰਡਣਾ ਬਿੱਲੇ ਨੇ ਬਿੱਲਾ ਵੀ ਮਗਰ ਨੂੰ ਹੁਕਮ ਹੋਣਾ ਹੁੰਦਾ ਜਾਂ ਉਹ ਰਸੇ ਕਿੱਤੀ ਉਹਨੇ ਜਾ ਪੈ ਇੱਕ ਗੱਲ ਕਹੀ ਹੁੰਦਾ ਕੱਲ ਵੀ ਕੋਈ ਗੱਲ ਪਿਛਲੀ ਧਾਰਨਾ ਤਹਿਸ ਵਹਿ ਕਰਤੀ ਫਿਰ ਕਹੇ ਪ੍ਰਭ ਕਹੇ ਸਿਮਰਨ ਦਾ ਦਰਬ ਨਾ ਬਸਾ ਜੇ ਕੋਈ ਪ੍ਰਭ ਕਾ ਸਿਮਰਨ ਕਰ ਲਵੇ ਤਿੰਨੇ ਲੋਕ ਤੋਂ ਪਰੇ ਚਲੇ ਜਾਂਦਾ ਦੁਨਿਆਵੀ ਚੌਥੇ ਲੋਕ ਚਲੇ ਬਖਮੀ ਸਮਾਦੀ 라ਉਂਡ ਦੀ ਲੋੜ ਨਹੀਂ ਮਾਰਾ ਫੇਰਨ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਮਨੁੱਖੀ ਰੋਹ ਦੇ ਬੰਝੋ ਨਿਸ਼ਕਤ ਹੁਣ ਦਿ ਲੋੜ ਨਿਸ਼ਕਤ ਹੁਣ ਦਿ ਲੋੜ ਕਬੜ ਤੇ ਅਗਲ ਕੋਟ ਲਗਾਉਣ ਹੈ ਜਦ ਖੁੱਲ ਲੈ ਜੇ ਕੋਟ ਲਗਾ ਹੈ ਕੋਟਾ ਲੈ ਪੈਣੀ ਆ ਉਹ ਖਿਲਾਫ ਆ ਬਣ ਜੇ ਕੋਟਾ ਲੈ ਦਿੱਤੀ ਇਹਨਾ ਬੋਲੇ ਰਾਜੇ ਤਾਂ ਕਰਕੇ ਇਹ ਭਗਤ ਦੀ ਰਾਜ ਕਰਦੇ ਕੁਟਲ ਦੀ ਕੀ ਰਾਜ ਹੁੰਦਾ ਨਹੀਂ ਕੁਟਲ ਦੀਤੀ ਉਹ ਕੁਟਲ ਦਾ ਪਾਪ ਨੂੰ ਕਹਿੰਦੇ ਨੇ ਪਾਪ ਦੀ ਗੱਠ ਹੈਦਰ ਜਨਮ ਹੋਰ ਮੁਕ ਹੋਰ ਇੱਕ ਦੰਦੀਤੀ ਐ ਚੋੜ ਬੋਲਣਾ ਵਿਸ਼ਵਾਸ ਲੈ ਲੈਣਾ ਫਿਰ ਮੁੱਕਰ ਜਾਵੇ ਇਹ ਦੀ ਕਥਨ ਦੀ ਕੀ ਇਥੇ ਕੀ ਦਿੱਤੀ ਆ ਲੋਕ ਦੀ ਸਾਧ ਹੱਦ ਦੀ ਦਿੱਤੀ ਨਹੀਂ ਸਾਨੂੰ ਸੱਚ ਖੜਦੇ ਨਹੀਂ ਸੀ ਸਗਾਈ ਉੱਥੇ ਆ ਨੀਤੀ ਚੱਲੂਗੀ ਜੇ ਨੀਤੀ ਇਹ ਬਣਾ ਸਕਦਾ ਕੋਈ ਬਣਾ ਸਕਦਾ ਨਹੀਂ ਉਹ ਉੱਥੇ ਮੇਰੇ ਕੋਲ ਬਾਦੂ ਐਥੇ ਨਾਲੇ ਖੋਂਦੇ ਇਦਾਂ ਲੋ ਵੀ ਜਾ ਕੇ ਸਾਡੇ ਬਾਦੂ ਉਹ ਪਹਿਲਾਂ ਹੀ ਨਹੀਂ ਜਾਣ ਦਿੰਦੇ ਪ੍ਰਭ ਕਹੇ ਸਿਮਰਨ ਪ੍ਰਭ ਕਹੇ ਸਿਮਰਨ ਦੁੱਖ ਜਮ ਦੁੱਖ ਜਮ ਜਮਦਾ ਦੁੱਖ ਪਰ ਤੂੰ ਜੋ ਪੈਦਾ ਹੋਇਆ ਹੈ ਪਰ ਤੂੰ ਜਬ ਕੀ ਉਹਦਾ ਪਰਮੋਤ ਕੀ ਪੈਦਾਂ ਦਾ ਪੈ ਹੈ ਪਹਿਲੇ ਤੋਂ ਵੱਡਾ ਕੀ ਦੁੱਖ ਹੈ ਪਹਿਲੇ ਤੋਂ ਸਾਰੀ ਦੁਨੀਆ ਪਰ ਤੇ ਦੁੱਖ ਕਿਸੇ ਆਸੂਲ ਕੋਈ ਹੋ ਜਾਏ ਹੈ ਜੀ ਬਿਮਾਰੀ ਹੋ ਜਾਏ ਉਹ ਕਹਿ ਵੀ ਮੈਨਾਂ ਮਰ ਜਾਣਾ ਬਾਹਰ ਬਸ ਹੋ ਜਾਏ ਅੰਦਰ ਦੁੱਖ ਰਹੂਗਾ ਇਸਨੂੰ ਕੋ ਫਾਂਸੀ ਲਾ ਕੋਈ ਵੀ ਕੁਝ ਵੀ ਹੋ ਸਕਦਾ ਹੈ ਤਾਂ ਪਹਿ ਹੀ ਦੁੱਖ ਬਣ ਗਈ ਹੈ ਸਿਮਰਨ ਤਾਲ ਪਰ ਕਰੇ ਪਰਬੋਤਾ ਜੈਲਨ ਹਾਰਿਆ ਲਾ ਰਿਹਾ ਮੈਂ ਤੁਹਾਨੂੰ ਵੀ ਦੇ ਦੇ ਰਿਹਾ ਪ੍ਰਭ ਕੈ ਸਿਮਰਨ ਹਾਂ ਸਿਮਰਨ ਕਰਨਾ ਪ੍ਰਭ ਦਾ ਪ੍ਰਭ ਕੈ ਸਿਮਰਨ ਤੋਂ ਬਾਅਦ ਕੈ ਕਰਕੇ ਉਦੋਂ ਬਾਅਦ ਕਰ ਤੂੰ ਪਿੱਛੋਂ ਪਿੱਛੋਂ ਪ੍ਰਭ ਦਾ ਸਿਮਰਨ ਕਰਾਂ ਨਹੀਂ ਕਰ ਸੋ ਰੋਟੀ ਖਾਣ ਤੋਂ ਬਾਅਦ ਪ੍ਰਭ ਨੂੰ ਸਿਮਰ ਕੇ ਭੁੱਖ ਮਿਟ ਜਾਂਦੀ ਹੈ। ਭੁੱਖ ਮਿਟ ਜਾਣੀ ਚਾਹੀਦੀ ਹੈ। ਭੁੱਖ ਮਿਟ ਜਾਂਦੇ ਹੈ। ਮਿਟ ਜਾਣੀ ਚਾਹੀਦੀ ਹੈ ਆ ਮਿਟ ਜਾਂਦੀ। ਇਹ ਹੈ। ਜਦੋਂ ਅਜਾ ਸਬਰਨਾ ਹੈ। ਜਦੋਂ ਲੱਗੇ ਆ ਤੂੰ ਚੜੇ। ਤੇ ਸਬਰ ਚੁੱਕਿਆ। ਤੇ ਤੇਜ ਨੂੰ ਕਰਾਉਂ ਦੁਆਪਰ ਤੇ ਪ੍ਰਭ ਦਾ ਗਿਆਨ ਹੁੰਦਾ। ਦੇਖੋ। ਕਿਉਂਕਿ ਉਹਦੇ ਨਾਲ ਜੁੜਿਆ ਉਹ ਸਟਾਪ ਕਰਦਾ ਹੁੰਦਾ। ਮਾਤ ਗਰਭ ਵਿੱਚ ਆਪਣਾ ਸਿਮਰਨ ਤੇ ਤੈਨੂੰ ਰੱਖਣਾ ਸਿਮਰਨ ਨਾਲ ਮਾਤ ਗਰਭ ਵਿੱਚ ਆਪਣਾ ਸਿਮਰਨ ਮਾਤ ਗਰਭ ਤੇ ਆਪਣਾ ਸਿਮਰਨ ਤੇ ਤੈ ਤੂੰ ਰੱਖਣ ਹਾਰੇ ਉਹ ਤੇ ਤਾਨੂੰ ਬਿਨਾਂ ਸਾਥੇ ਹੀ ਬਚਾਇਆ ਸਾਰੀ ਸਿਆਂ ਦਾ ਫਿਰ ਵੀ ਜੁੰਦਾ ਰਹੇਗਾ ਮਾਤ ਗਰਭ ਵਿੱਚ ਪਰ ਸਿਮਰਨ ਆਪਣਾ ਦਿੱਤਾ ਇਥੋਂ ਸਾਫ ਹੋ ਜਾਂਦਾ ਬਿਨਾਂ ਸਾਥ ਹੁਣ ਤੇ ਵੀ ਜੁੰਦਾ ਰਹਿ ਸਕਦਾ ਇਹ ਤਾਂ ਜੋ ਬਣਦਾ ਸੀ ਜੀਵਨ ਤਾਂ ਉਹ ਵੀ ਸੀ। ਕੋਈ ਨਾ ਸੀ ਜੀ ਪੂਰੀ ਸੰਗਤ ਨੂੰ ਹੋ ਸਕਦਾ। ਹਾਂ? ਮਤਲਬ ਕਿ ਹੋਇਆ। ਹਾਂ ਸਵੰਧ ਹੈ ਉਹ ਜੁੜਿਆ ਹੋਇਆ। ਉਹਦੀ ਆਵਾਜ਼ ਨਾਲ ਜੁੜਿਆ ਹੋਇਆ। ਚਾਹੇ ਉਹ ਆਵਾਜ਼ ਨਖੜੇ ਵੀ ਜਾ ਮਾਇਆ 'ਚ ਜੋੜ ਨਾਲ ਜੁੜਿਆ। ਹਾਇ ਤਾਂ ਉਸੇ ਦੀ ਆਵਾਜ਼ ਹੋਇਆ। ਤਾਂ ਉਸੇ ਦੀ ਹੈ। ਫਿਰ ਗਿਆ ਦੇ ਵਿੱਚ ਜੁੜਿਆ ਰੱਖਿਆ ਉਹਦੇ। ਕਿ ਜਗ ਜੀਵਨ ਹੈ ਜਗ ਦੇ ਵਿੱਚ ਜੀਵਨ ਜਿਹੜਾ ਹੈਗਾ ਪ੍ਰਭ ਜਗ ਦੇ ਵਿੱਚ ਜੀਵਨ ਜੇ ਉਹਦੇ ਨਾਲ ਆਪਾਂ ਆਪਣੇ ਮੂਲ ਨਾਲ ਜੁੜਿਆ ਜਗ ਦਾ ਜੀਵ ਚੱਲਦਾ ਸੁਤੇ ਪੈ ਨਾਲ ਟੁੱਟ ਜੀਦਾ ਆਪਣੀ ਮੂਲ ਹਾਇ ਵਾਹ ਟੁੱਟ ਜਾਈਦਾ ਆਪਣੀ ਤੁਮਾਰੇ ਨੀਂਦ ਮੌਤ ਜਦੋਂ ਮੇਰੇ ਕੋਲ ਜਾਂਦੀ ਬਸ ਸੋਨ ਦੀ ਬੰਦੀ ਨਹੀਂ ਰੱਬ ਦਾ ਸਰਮਣ ਕੋ ਰੱਬ ਬੋਲਦਾ ਸਾਨੂੰ ਹੋਰ ਕੁਝ ਨਹੀਂ ਬੋਲਦਾ ਰੱਬ ਬੋਲਦਾ ਆਪਣਾ ਆਪਾ ਹੀ ਗਿਆ ਆਪਣਾ ਆਪਾ ਗਿਆ ਜੇ ਥੈਲਾ ਹੀ ਭੁੱਲ ਗਿਆ ਤੇ ਸਭ ਸਾਰਾ ਸਭਾ ਥੈਲੇ ਜੇ ਭੁੱਲ ਗਿਆ ਉਹ ਪਾਕੀ ਤਾਂ ਥੈਲਾ ਹੋਊਗਾ ਜੇ ਜਿੱਦੇ ਲੋਡ ਹੋਊਗੀ ਆਊਗਾ ਯਾਦ ਫਿਰ ਤਾਂ ਥੈਲਾ ਭੋਲ ਕੇ ਦੇਖ ਲਊਗਾ ਦੇਖੇਗੀ ਉਥੇ ਸਰੀਰ ਦੀ ਰੱਖੇ ਦੀ ਗੱਲ ਕੀਤੀ ਮਾਤ ਗਰਮ ਆਪ ਨੂੰ ਸੰਭਲਦੇ ਪੈਸੇ ਤੁਮ ਰੱਖਣਾ ਹਰੇ ਰੱਖਣ ਹਰੇ ਦਾ ਕਿ ਭਾਗ ਮਰ ਕੇ ਉਥੇ ਦਾ ਬਿਲਕੁਲ ਪ੍ਰਭ ਉਹ ਵੀ ਬਣ ਰੱਖ ਕੇ ਸਾਹ ਦਾ ਮਤਲਬ ਸਰੀਰ ਨਹੀਂ ਰੱਖਿਆ ਜੀ ਉਹ ਗੱਲ ਆ ਜਾਗਦਾ ਜਾਗਦਾ ਜੀਵਨ ਸੁਣ ਮੌਤ ਹੁਣ ਤੇ ਸੌਦਾ ਨਹੀਂ ਜੇ ਨਾ ਜੇ ਸੌ ਗਿਆ ਉਥੇ ਭੁੱਲ ਫਿਰ ਉਥੇ ਵੀ ਵਿਸਰਜੂ ਲੋਈ ਜਾਗਦੇ ਨੇ जागते को जब तक <इज़ान्द> ले सामने कुछ है कि आ जाओ गल्ला वो सवाल हुन पैदा होन दे रब को वो गाह दिया ना जब तो कल तो ना पहला ही फिर रदियां रह जानी रदी ऊपर जासी उससे नाले सवाल किसे पूछे थोन जाके सवाल कई आउंदे फिर जी ਜਿਹੜਾ ਜਾਗਣਾ ਗੁਰਮੁਖ ਜਾਗਣਾ ਨੀਂਦ ਰੋਹੀਏ ਉਹੀ ਹੈ ਉਹ ਕੀ ਹੈ ਜਾਗਣਾ ਨੀਵਣਾ ਸੌਣਾ ਬੋਤਾ ਸੌਣਾ ਬੋਤਾ ਹਉਤੇ ਕਿਰਨ ਸੌਣ ਹੋਏ ਕੋ ਲੰਬੇ ਗੁਰ ਦਸਾ ਬਹੁਤ ਰਹੁੰਦੀ ਦਾ ਕੋਈ ਚੀਜ਼ ਹੈ ਜੰਮੜ ਬਲਣ ਦਾ ਭਰਮ ਗਿਆ ਗੁਰ ਸਾਖੀ ਤਾਂ ਗੱਲ ਹੋਰ ਕੀ ਹੈ ਅਸੀਂ ਗੱਲਾਂ ਕਰਕੇ ਨੰਮ ਫਟਾਫਟ تا تک بھی بوٹ کے جا کے سایتا پل تک جا کے اپیا جتھے ہنتے سارے جوڑ کے نا کدی سی گل سب کو پی ساڈے کول لگا نو لے آ کے تے پھٹکا نہ ہووے اے تھوڑا ایتھے گئی ہے تاں گل کہی دی ہے جمبل باندا پرب گیا ਜਿੱਦਣ ਜੰਮਣ ਵੱਲ ਤਾਂ ਭਰਮ ਅਸੀਂ ਮੰਨ ਲਿਆ ਵੀ ਭਰਮਿਆਂ ਨਾਲ ਜੰਮਣ ਬੰਦ ਹੈ ਦੀ ਉਹਦਣ ਵਕਈਂ ਪਰ ਬਣ ਜੂਗਾ ਕਲਮ ਉਦੋਂ ਦੇ ਖੜੀ ਉਹਦਣ ਵਕਈਂ ਪਰ ਬਣ ਸਾਏ ਭਰਮੈਂ ਪਰ ਕਲਪਦਲ ਕੇ ਸੁਪਨਾ ਜਿਦੀ ਪਰ ਹੁਲੋ ਗਿਆ ਸੁਪਨਿਆਂ ਚ ਲੱਗ ਗਿਆ ਜਗਦਾ ਹੈ ਜਿਆਦਾ ਜਿਆਦਾ ਪਤਾ ਲੱਗਦਾ ਤੂੰ ਸੁਪਨਾ ਦੇਖਦਾ ਸੀ ਜਦੋਂ ਜਦ ਸੁਪਨਾ ਦੇਖਦਾ ਸੁਪਨਾ ਹੀ ਸੱਚਾ ਹੁੰਦਾ ਸੁਪਨਾ ਦਾ ਪਤਾ ਹੀ ਜਾਗ ਕੇ ਬਾਅਦ ਲੱਗਦਾ ਇਹ ਭਰਮ ਦਾ ਵੀ ਪਤਾ ਜਾਗ ਤੋਂ ਬਾਅਦ ਲੱਗਦਾ ਜਾਗੂ ਕਾ ਮਨਨੜ ਸਵਾਲ ਪੈਦਾ ਹੋਇਆ ਨਾ ਜਾਗੂ ਤੋਂ ਬਹੁਤ ਪੈਦਾ ਹੋ ਗਿਆ ਜਾਗੂ ਕਪਸੇ ਬਹੁਤ ਆਪਕ੍ਰੋਤੀ ਗੱਲ ਆ ਗਈ ਇਸੇ ਬੰਦ ਕਿ ਜਗੂਗਾ सुपना ਤੇ ਚਲ ਗਈ ਹੈ ਛੁੜੀ ਤਾਂ ਜਾਣਈ ਆ ਸੁਪਨਾ ਤਾਂ ਸੁਪਨਾ ਹੀ ਆ ਬੁੱਢੜ ਨਾਲ ਕੀ ਬਣਾਲਾ ਸਾਂਜੀ ਬੁੱਢਜਗ ਸੱਚ ਕਰ ਜਾਣਾ ਇਹ ਸੁਪਨਾ ਹੀ ਹੈ ਇਹ ਬਣਨ ਤਨ ਜਦੋਂ ਤੁਸੀਂ ਮੰਨ ਲਿਆ ਜੀਵਨ ਹੈ ਸੁਪਨਾ ਉਹਦਲ ਵਾਖਾ ਹੀ ਸੁਪਨਾ ਬਣ ਜੂ ਬੁੱਢੜ ਜੇ ਸੁਪਨਾ ਤਾਂ ਸੁਪਨਾ ਲਗਾਠੇ ਬਦਲੋ ਸੋ ਜੀਉ ਤੋਂ ਨਾ ਤੁੱਲ ਬੋ ਬੋ ਕੋਲੇ ਕਿ ਯੋ ਨਾ ਜਦੋਂ ਖਜਨ ਜਗਦੇ ਨਹੀਂ ਆ ਸੁਪਨੇ ਜਗਦੇ ਨੇ ਤਾਂ ਹੀ ਮਨ ਨੂੰ ਸੱਚ ਕਿਹਾ ਮਨ ਸੱਚ ਕਿਹਾ ਸੰਸਾਰੀ ਮੌਤ ਆ ਉਹ ਸੱਚ ਇੱਥੇ ਤੋਂ ਸਾਡੇ ਸਾਨੂੰ ਸੱਚ ਲੱਗਦਾ ਹੈ ਅਸਲ ਵਿੱਚ ਜੀਵਨ ਸੱਚ ਹੈ ਬਹੁਤ ਜਮਣ ਮਾਤਮਕ ਭਰ ਗਿਆ ਜਮਣਾ ਵਰਨਾ ਭਰ ਮ ਜੀਵਨ ਤਾਂ ਸੱਚ ਹੈ ਸੱਚ ਇੱਥੇ ਨਹੀਂ ਹੈ ਸੱਚ ਆਦ ਹੈ ਸ਼ਬਦਾ ਤੇ ਉਹ ਤਾਂ ਸਦਾ ਹੀ ਰਹਿੰਦਾ ਫਿਰ ਸੱਚ ਸੱਚ ਸਦਾ ਰਹਿੰਦਾ ਜਿਹੜਾ ਸਦਾ ਰਹਿੰਦਾ ਉਹ ਹੀ ਤੇ ਜੀਵਨ ਵੀ ਸਭ ਜੀਵ ਹੈ ਉਹ ਹੀ ਉਹ ਹੀ ਪਹਿਚਾਨ ਹੈ ਸਦਾ ਰਹਿਣ ਵਾਲਾ ਹੀ ਸੱਚ ਹੈ ਜੋ ਸਦਾ ਨਹੀਂ ਰਹਦਾ ਉਹ ਸੱਚ ਨਹੀਂ ਉਹ ਟਾਈਮਲੀ ਸੱਚ ਹੋ ਸਕਦਾ ਹੈ ਟਾਈਮਲੀ ਸੰਸਾਰ ਸੱਚ ਹੈ ਕਿ ਬਦਿਆਂ ਵੀ ਹੈ ਆਜੋ ਤੇਰੇ ਖੰਡ ਬਰ ਬੁਲਦ ਨੇ ਸੱਚੇ ਨੇ ਵੀ ਲੋਪ ਆਤਮ ਸੱਚੇ ਦੇ ਵੀ ਹੈ ਕੁਛ ਇਹ ਵੀ ਗੱਲ ਹੈਗੀ ਵਿਦਵਾਨਾਂ ਨੇ ਆ ਮੰਨ ਲਿਆ ਨਹੀਂ ਨੇ ਸੁਪਨਾ ਵਾ ਕਿਹਦੀ ਨੇ ਕਿ ਕੁਛ ਵੀ ਕੁਝ ਹੈ ਆ ਨਾ ਉਹਨਾਂ ਨੇ ਸੋਚੀ ਕਿ ਜੀਵਨ ਸੁਪਨੇ ਸੁਪਨਾ ਨਹੀਂ ਹੈ ਸੁਪਨਾ ਜੋ ਸਰਦਾਰ ਕੇ ਕਦੋਂ ਗਿਆ ਸੁਪਨੇ ਕੀ ਜੋ ਤਗਾ ਜੇ ਜੀਵਨ ਦਾ ਸੱਚ ਕਰ ਜਾਣਾ ਇਹ ਦੇਖੀ ਉਹ ਚੱਕਰ ਹੋ ਰਿਹਾ ਪਰ ਇੱਥੇ ਫਿਰ ਪੈਂਦਾ ਤੁਹਾਡਾ ਐਸਾ ਸੱਚ ਦੇ ਆਪ ਤੁਸੀਂ ਹੋਰ ਲੜੇ ਜੇ ਹਮੇਸ਼ਾ ਜੁੜਦਾ ਰਹਾਂ ਹਾਂ ਮੰਨ ਲਿਆ ਹਮੇਸ਼ਾ ਰਹਿਣ ਵਾਲਾ ਮੰਨ ਲਿਆ ਟਾਈਮ ਲਈ ਮੰਨ ਮੰਨੋ ਪਸਾ ਇਥੇ ਉਹਨਾਂ ਦਾ ਆਹੀ ਫਰਕ ਹੈ ਸਭ ਤੋਂ ਜਾਂ ਤੁਸੀਂ 2 ਲੱਖ ਜਣੋਂ ਆਪ ਅਵਰੋਧਨ ਅਰਥ ਹੋ ਜਾਂਦੀ ਹੈ ਆਪ ਅਵਰੋਧ ਹੋ ਗਏ ਅਰਥ ਉੱਥੇ ਹੱਥ ਇਹ ਰਹਿ ਤੈਨ ਜੀਵ ਨੂੰ ਸਾਥੀ ਦਾਰ ਤੇ ਭੁੱਲਿਆ ਮਰਨਾ ਮਨੋਂ ਵਿਸਾਲਾ ਵਹਿੰਦਾ ਤੇ ਰਣੀ ਲੂ ਸਾਹਨਾ ਔਰ ਉਹ ਫੇ ਮਰਨਾ ਲਿਆਦਾ ਕਿ ਇੱਕ ਵਾਰ ਫੇ ਮਰਨਾ ਹੈ ਉਹ ਇੱਕ ਵਾਰ ਨਾ ਕਿਸੇ ਜਨਮ ਨੇ ਨਾ ਕਿਚ ਮਰੇ ਇੱਕ ਵਾਰ ਗਿਆ ਤਾਂ ਮਰ ਗਿਆ ਇਹ ਵੀ ਗੱਲ ਸੰਸਾਰ ਆ ਤੋ ਉਹ ਅਸਲ ਕੀ ਹੈ ਫਰਨਾ ਇਹ ਬੜਾ ਜੰਬੂ ਜੀ ਦਾ ਨਫਰਤੀ ਸੰਸਾਰੇ ਮਨ ਨੂੰ ਮਨਣਾ ਚਾਹੁੰਦਾ ਜੀ ਜੇ ਲਾ ਮਨ ਹੈ ਛਾਵਾਂ ਨੇ ਵਰਜਾਦੀਆਂ ਨੂੰ ਸਤਸਰੀ ਸਾਹਿਬ ਮੰਨਦੇ ਹੋਣ ਖਤ ਹੋ ਜਾਂਦੀ ਹੈ ਬੰਦੇ ਭਟਕਣੋਂ ਮੁੱਕ ਜਾਂਦੀ ਹੈ ਸਿਰ ਛੱਡਦੇ ਆਪਾਂ ਕਹਿਣਾ ਦੀ ਬੀਰ ਦੇ ਤੰਦਰੁਸਤ ਹੋ ਗਿਆ ਹੁਣ ਇਹਨੂੰ ਕੋਈ ਬਿਮਾਰੀ ਨਹੀਂ ਉਹਨਾਂ ਨੇ ਹੈ ਕਰ ਆਪ ਦੀ ਕਰਨ ਕਹਿੰਦਾ ਨਹੀਂ ਬਾਰੇ ਦੇ ਬਾਦ ਇਹ ਸੁੱਕੀ ਹੋ ਜਵੇ ਸੜ ਸਰੀਰ ਚ ਅਪ ਆ ਬੀ ਉਹ ਜੀ ਜਿੰਨਾ ਜਨ ਮਾਇਆ ਨਾਲ ਜੁੜਿਆ ਹੋਣਾ ਨਾ ਚੇਤਨਾ ਉਹ ਨਾਲ ਜੁੜੀ ਹੋ ਸਕਦੀ ਯਾਰੋ ਇਹ ਤੋਂ ਕੋਈ ਨਹੀਂ ਆ ਆਤਮਾ ਨਾਲ ਜੁੜ ਸਕਦੀ ਸਰੀਰ ਨਾਲ ਜੁੜਿਆ ਕਰਕੇ ਬਿਹੂਸ ਕਰਦਾ ਹੈ ਤੁੱਖ ਜੀ ਔਖ ਤਾਂ ਕੈ ਨੂੰ ਮਜੂਰ ਹੁੰਦੇ ਔਖ ਲੱਗਦੀ ਹੈ ਜਰੀਦ ਦਾ ਔਖੀ ਹੈ ਠਰਮੀ ਲੱਗਦੀ ਹੈ ਸਰਦੀ ਲੱਗਦੀ ਹੈ ਮਹਿਸੂਸ ਹੁੰਦੀ ਹੈ ਜੇ ਮਹਿਸੂਸ ਨਾ ਹੋਵੇ ਰੱਖਿਆ ਕਿ ਮੈਂ ਨੂੰ ਬਚਾਵੇ ਕਦੇ ਜਰੀਦ ਹੈ ਜੇ ਟੈਂਪਰੇਚਰ ਜਲਾ ਜਾਵੇ ਜਿਵੇਂ ਰਿਜਲ ਜੁ ਮਹਿਸੂਸ ਨਾ ਹੋਵੇ ਹਾਂਜੀ ਪ੍ਰਭ ਕਹ ਸਿਮਰਨ ਕਾਲ ਪਰ ਹਰੇ ਪ੍ਰਭੂ ਕੈ ਸਿਵਰ ਨੂੰ ਦੁਸ਼ਮਣੋਂ ਟਰੇ ਪ੍ਰਭੂ ਕੈ ਦੇਖੋ ਸਾਰੇ ਇਕੱਲੀ ਇਕੱਲੀ ਗੱਲ ਹੈ ਕਾਲਾ ਕਾਲ ਤੱਕ ਲੋਕ ਦੇ ਤੇ ਗੱਲ ਨਾ ਤੇ ਲੋਕ ਦੇ ਬਾਹਰ ਗਲ ਤੱਕ ਕਾਲ ਹੈ ਉਹ ਤੇ ਅਕਾਲ ਹੈ ਅਕਾਲ ਨੇ ਸਾਰੇ ਉਹਦਾ ਤਾਂ ਕੀਤਾ ਹੋਇਆ ਕਾਲ ਹੈ ਸੱਚਖੰਡ ਤੋਂ ਕਾਲ ਪੈਦਾ ਕੀਤਾ ਹੋਇਆ ਜਿਹੜਾ ਹੈ ਨਾ ਸਾਰਾ ਬਾਰ ਬਾਰ ਅਕਾਲ ਹੈ ਜਿਹੜਾ ਸੱਚਖੰਡ ਸਾਰਾ ਉਹਦਾ ਬਣਾਇਆ ਹੋਇਆ ਉਹ ਉਹਦਾ ਕਾਲ ਮੰਨਿਆ ਜਾ। ਜੇ ਚਲਿਆ ਹੀ ਉੱਥੇ ਜਾਣਾ ਜਿਹੜਾ ਜਾਉਂਦਾ ਹੀ ਉੱਥੇ ਚਲਾ ਗਿਆ ਉਹਦਾ ਹੁਕਮ ਤੋਂ ਪਰੇ ਹੈ ਉਹ ਕਾਲ ਤਾਂ ਇੱਥੇ ਹੈ ਇਹਨਾਂ ਦੇ ਲਾਗੂਆ ਕਾਲ ਹੋ ਜਲਾ ਗੁਦੀਸ ਜਿਹੜਾ ਪਾਣੀ ਦੇ ਵਿੱਚ ਹੋਵੇ ਉਹ ਕਾਲਾ ਗੁੱਡੀ ਹੁੰਦਾ ਹੁੰਦਾ ਤੇ ਜਿਹੜੇ ਹਕਮ ਦੇ ਵਿੱਚ ਹੁੰਦੇ ਨੇ ਨਾ ਉਹ ਬਾਇਆ ਜਿਹੀ ਹੁੰਦਾ ਹੈ ਉਹ ਕਮ ਰਹਿਦਾ ਗਿਆ ਆ ਜਿਹੜਾ ਹਕਮ ਹੁੰਦਾ ਆਕਾਸ਼ ਤੇ ਹਨਾ ਆ ਥੱਲੇ ਨੇ ਉੱਤਦਾ ਹੋ ਬਣ ਜਿਨੇ ਹੁੰਦਾ ਹੁੰਦਾ ਜੇ ਪਾਣੀ ਆਜੂ ਸਲਿਜ਼ਰੀਟ ਵੀ ਆਜੂਗਾ ਉਹ ਕਦਾਂ ਨੂੰ ਥੁਰੂਗਾ ਜੇ ਪਾਣੀ ਵਾਲਾ ਹੋਊਗਾ ਮਾਇਆ ਵਾਲਾ ਹੋਊਗਾ ਕਦਾਂ ਨੂੰ ਥੁਰੂਗਾ ਉਹ ਜੀ ਤਨਾਂ ਨੂੰ ਨਹੀਂ ਸੁਣਦੇ ਮਾਇਆ ਦਾ ਪਰਿਆ ਜੋ ਕਾਸ਼ਵਾਨੀ ਹੁੰਨੇ ਹੋ ਇਹ ਮੈਚ ਕਾਸ਼ਵਾਨੀ ਹੈ ਨਾ ਆਪਣਾ ਕੋਈ ਇਨਸਟਰੂਮੈਂਟ ਨੂੰ ਸੁਣ ਲੋ ਇਸ ਕਰਕੇ ਉਹ ਕਾਸ਼ਵਾਨੀ ਨਹੀਂ ਜਿੜੀ ਉਹਦਾ ਟਕਰਾ ਨਹੀਂ ਕਰਦੇ ਜੇ ਨਾ ਉਹ ਨਹੀਂ ਸੁਣਦੀ ਜਿੱਕਰ ਤਨ ਸੁਣਦੀ ਹੈ ਆਪਣੀ ਅੰਤਰਾਤਮਾ ਦੀ ਕਾਸ਼ਵਾਨੀ ਆਪਣੇ ਕੰਨਾਂ ਨੂੰ ਸੁਣਦੀ ਹਾਂ ਇੱਕ ਤਾਂ ਤਾਂ ਉੱਥੇ ਉੱਥੇ ਤੱਤੇ ਇਕਦ ਹੁਆ ਹੈ ਦੂਏ ਦਤਬਾ ਨਾ ਟਕਰਾ ਨਹੀਂ ਹੁੰਦਾ ਦੋ ਤਕਤਾਂ ਦੇ ਆਵਾਜ਼ ਕੋਈ ਜੜੀ ਪੈਦਾ ਹੁੰਦੀ ਹੈ ਦੋ ਤਕਤਾਂ ਦੇ ਟਕਰਾਉ ਤੋਂ ਉਹ ਕੰਨ ਨਹੀਂ ਸੁਣਦੇ ਜਿੱਤੇ ਇੱਕੋ ਹੀ ਤਕਤ ਹੈਗਾ ਉਸੇ ਵਾਜਦੀਆ ਉਹ ਕੰਨ ਨੂੰ ਨਹੀਂ ਸੁਣਦੇ ਅਨਾਹਦ ਬਾਣੀ ਹੁੰਦੀ ਹੈ ਉਸ ਆਨਦਰੂਪ ਅਨਾਹਦ ਬਾਣੀ ਚਰਨ ਸ਼ਰਨ ਜੇ ਉਹਦੇ ਵਿਆਖਾ ਕਿੰਨੀ ਹੋਈ ਅਗੀ ਲਾ ਕੇ ਬਾਹਰ ਬ੍ਰਿਕੀ ਨਾ ਉਹ ਤੋਂ ਬ੍ਰਿਕੀ ਹੁਣ ਗੱਡਾਂ ਨਹੀਂ ਬਾਰੇ ਕੀ ਹੈ ਹਾਂ ਪ੍ਰਭ ਕਾਲ ਪਰ ਹਰੇ ਪ੍ਰਭ ਕੈ ਸਿਵਰਨ ਦੁਸ਼ਮਣ ਟਰੇ ਕਾਲ ਪਰ ਹਰੇ ਆਲੂ ਦਾ ਪ੍ਰਹਾਰ ਕਰਦਾ ਹੈ ਰਬ ਦੇ ਸਮਝੋੜਾ ਪ੍ਰਹਾਰ ਕਰਦਾ ਨਾ ਥਾਲ ਕੀ ਅਸਲ ਵਿੱਚ ਕਾਲਪਨਾ ਹੀ ਕਾਲ ਚਲੋ ਆਪਣੇ ਅੰਦਰ ਕਲਪਨਾ ਉਠੇ ਕਲਪਨਾ ਦੇ ਸੱਚ ਦਾ ਡੰਡਾ ਲੀ ਖੜਾ ਹੋ ਕਲਪਣਾ ਜਿੱਥੋਂ ਛਿੰਦਾ ਸੀਦਾ ਤਲਵਾਰ ਘੱਡੀ ਖੜਾ ਪਰ ਹਰੇ ਕੋਈ ਪ੍ਰਹਾਰ ਤਾਂ ਰਾਖੀ ਖੜਾ ਉਹਨੂੰ ਦਾ ਦਸੂਤ ਕੋਲ ਬਗੂ ਉਹਨੇ ਅੰਦਰ ਤੇਛਾ ਉਹਦੀ ਨਾਮ ਆਇਆ ਸੀ ਉਹਦੇ ਸਿਰ ਤੇ ਡੰਗ ਲਈ ਜਿਹੜਾ ਖੜਾ ਉਹ ਕਾਲਪਰ ਹਰੇ ਕਹਿੰਦੇ ਨੂੰ ਜੇ ਨਾ ਤੇ ਇਹ ਹੀ ਤੇ ਆਣਾ ਵਰਤਾਂ ਕਿਹਾ ਉਹ ਤਾਂ ਹੀ ਮੈਂ ਗਾਦੇ ਧਿਆਨ ਰੱਖਣਾ ਤੇ ਅੱਜ ਆਵੇ ਕਿ ਕਿਵੇਂ ਭੈਜਾ ਜਵਾ ਕਾ ਜੇ ਪੱਕਾ ਅੰਨਾ ਕਰੀਏ ਜਵਾ ਆ ਜੁਗਾ ਕਹੇ ਸੂਰ ਕੋਈ ਨਾ ਮੋਟਰ ਜੁਨਾ ਦੇ ਇਸ ਤੋਂ ਪੈਰਲਲ ਦੋ ਮੋਟਰ ਲੱਗੇ ਨੇ ਪਰ ਦਿਵਾਰ ਦੇ ਨਾਲ ਲੱਗੇ ਨੇ ਸਹੀ ਹੈ ਇਹ ਲਗਾ ਮਾਰਿਆ ਉਸ ਉੱਪਰ ਮੁਰਦਾ ਸਾਹੋਬ ਨਾ ਹਉਗਾ ਦਾ ਤੱਕ ਬਹੁਤ acha ਹੈ ਕੋਈ ਇੱਕ ਬਚਾ ਨਹੀਂ ਹੁੰਦਾ ਜੋ ਜਮਨ ਤਰਾਹ ਆਪੇ ਤਰਨ ਕਹਾ ਤੇ ਤੁਸੋਂ ਤਰਾਹ ਤਰਾ ਤੱਕ ਬਜਨਾ ਜੂਨਾ ਬਹੁਤ ਬੈਠਾ ਮੋੜਿਆ ਪ੍ਰਭੂ ਕੈਸੇ ਬਰੂ ਦੁਸ਼ਮਣ ਕਰੇ ਬਹੁ ਬੈਠੇ ਨਹੀਂ ਲਵਣਾ ਸਭ ਦੁਸ਼ਮਣ ਦੁਸ਼ਮਣ ਬਾਹਰ ਨਹੀਂ ਬਣਾ ਰਹੇ ਦੁਸ਼ਮਣ ਦੁਸ਼ਮਣ ਅੰਦਰ ਲੈ ਲੜਾਈ ਅਦਲੀਆ ਬਾਹਰ ਦੁਸ਼ਮਣ ਕੀ ਕਹਿਦੇ ਨੇ ਬਾਰ ਕੁਦਜਵੰਡਾ ਫਿਰ ਆ ਗਿਆ ਸਾਡਾ ਪਰ ਆਪ ਸਮਰਤ ਕਸ਼ ਬਿਗੜਨਾ ਲੱਗੇ ਹਾਂ ਜੇ ਪ੍ਰਭਾ ਦਾ ਸਮਝ ਪ੍ਰਭਾ ਜੁੜਿਆ ਰਹੇ ਆਪਣੇ ਅੰਤਰਾਤਮਾ ਨਾਲ ਜੁੜਿਆ ਰਹੇ ਓਟੀ ਗੱਲ ਫਿਰ ਆਪ ਸਮਝਦੇ ਆਂ ਤੇਰਾ ਖਾਣਾ ਜੁੜਿਆ ਰਹੇ ਆਪਣੇ ਅੰਤਰਾਤਮਾ ਨਾਲ ਜੁੜਿਆ ਰਹੇ ਕੋਈ ਵਗਰ ਨਹੀਂ ਬੰਦਦਾ ਧਿਆਨ ਬੁਰੇ ਪਾਸੇ ਬਰਾਈ ਵੱਲ ਜਾਂਦਾ ਹੀ ਜੀ ਬਰਾਈ ਵੱਲ ਜਾਂਦੇ ਹੀ ਬਿਲਣਾ ਉਹ ਕਿ ਜ਼ਦਾ ਕੋਈ ਵੀ ਕਰ ਖਿਆਲ ਸਮਾਚੀ ਨਹੀਂ ਆ ਸਕਦਾ ਜਿਹੜਾ ਨਾ ਤੁਹਾਡੀ ਜਿਹੜੀ ਰਸਤਾ ਜਿਹੜੇ ਚੱਲਦੇ ਆ ਅਸੀਂ ਸੱਚੇ ਮਾਰਗ ਜਿਹੜੇ ਚੱਲਦਾ ਉਹਦੇ ਰਾਹ ਦੇ ਵਿੱਚ ਕੋਈ ਕਿ ਕਰਦੀ ਪੈਂਦਾ ਜੇ ਉਹ ਆਪਣੇ ਅੰਤਰ ਆਤਮਾ ਨਾਲ ਹੀ ਜੁੜਿਆ ਪ੍ਰਭ ਦਾ ਸਮਾਧ ਨੂੰ ਅੰਤਰ ਆਤਮਾ ਨਾਲ ਜੁੜਿਆ ਰਹਿਣ ਦੀ ਗੱਲ ਆ ਕੋਈ ਨਹੀਂ ਉਹ ਹੀ ਗੱਲ ਹੈ ਕੋਈ ਰਿਗਰਟ ਨਹੀਂ ਹੈ ਰਿਗਰਟ ਨਹੀਂ ਹਾਂ ਪਰਮਕੇਸ਼ ਆਪਾਂ ਦੇਖੋ ਤੇ ਕਿਉਂਗਾ ਜੋ ਆਪਾਂ ਆਪ ਤੌਰ ਤੇ ਸਭ ਤੋਂ ਜ਼ਿਆਦਾ ਕੰਮ ਬੜਾ ਹੈ ਕਰੋਨਾ ਕਿਸੇ ਦਾ ਇਤਜ਼ਾਜ ਇੱਥੇ नहीं ਖਾਣਾ नहीं ਖਾਣਾ ਕਿਸੇ ਦੀ ਇਤਜ਼ਾਜ नहीं ਨਹੀਂ नहीं ਨਹੀਂ ਕਰਦੀ ਰਹੀ ਬਰੇ ਨਾ ਜੇ ਕਦਾਂ ਦੇ ਬੁਰੇ ਢੜੇ ਦੂਏ ਚ ਖੜਾਗੇ ਸਾਜ ਨੂੰ ਛੱਡ ਕੇ ਤੇ ਰਿਣ ਬਹਿ ਗਿਆ ਤੇ ਉਹ ਜੀ ਬਰੇ ਨਾ ਇਤਜ਼ਾਜ ਮਦਦ ਤਾਂ ਹੀ ਕਰ ਰਿਹਾ ਇਤਜ਼ਾਜ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਸਰ ਨਾ ਕੋਈ ਵੈਰੀ ਦਾ ਹੈ ਬਗਾਨਾ ਮੈਂ ਬਗਾਨਾ ਤਾਂ ਹੋ ਗਿਆ ਹਮਸਾ ਬੈਦੀ फिर ਸੀ ਬਗਾਨਾ ਤਾਂ ਹੋ ਗਿਆ ਕਿ ਕਪੜਾ ਇੱਕ ਬਗਾਨਾ ਸਰ ਆਪਣੇ ਨੇ ਮਸ ਕਰਦੇ ਆ ਦੂਏ ਦੂਵਾ ਸਮਝਦੇ ਆ ਫਿਰੇ ਸ਼ਰਤਾਂ ਦੇ ਵਿੱਚੋਂ ਪਿੱਦ ਨੂੰ ਪੈ ਗਿਆ ਇਹਨੂੰ ਬਗਾਨਾ ਜੇ ਸਾ ਆਪਣਾ ਸਾਡੇ ਜੀਵਨ ਦਾ ਸਮਝ ਆ ਗਈ ਉੱਥੇ ਇਹ ਰਾਮ ਦੁਹਾੜੀ ਇਹ ਕਰਵਾਣੀ ਅਸਰ ਦੇ ਵਿੱਚ ਰਾਮ ਦੁਹਾੜੀ ਸੋਸ ਹੈ ਜੋ ਮਰਜੀ ਵਾ ਇਹਦੇ ਤੇ ਖਰਾ ਉਤਰਨਾ ਜੋ ਲਿਖਿਆ ਹੋਇਆ ਸਭ ਕੁਝ ਖਰਾ ਆਪਣੀ ਆਪਣੀ ਜਿਹੜਾ ਖਰਾ ਉਤਰੂ ਜਦ ਕੀਤੀ ਸੋਹ ਬਾੜ पे ਉਹ ਜਿਹੜਾ ਰੂਰਾ ਜਿਹੜਾ ਖਰਾ ਆਪਣਾ ਆਪਣਾ ਉਤਰ ਜੂਗਾ ਉਹ ਬਾੜ ਤੇ ਬਸ ਇਤੋਂ ਵੱਡੀ ਕੋਈ ਵੀ ਉਪਲਬਧੀ ਸੰਸਾ ਚ ਕਿਸੇ ਦੀ ਨਾ ਹੋਈ ਐ ਨਾ ਹੋ ਸਕਦੀ। ਇਹ ਉਹ ਨੂੰ ਬਣ ਸਕਦੀ ਆ ਜੇ ਉਹ ਇਹ ਕਰ ਲਵੇ। ਕੋਈ ਚੱਲਣਾ ਚਾਹੁੰਦਾ ਨਹੀਂ ਚਾਹੁੰਦਾ ਉਹ ਆਪਣਾ ਇਹੋ ਆਪਣੇ ਅੰਦਰ ਦੇ ਵਿੱਚ ਚੁੱਲ ਜਾ। ਗੁਰਬਾਣੀ ਇਹ ਗੱਲ ਕਹਿੰਦੀ ਐ ਔਰ ਜਿਹੜੇ ਖਰੇ ਆ ਤਾਂ ਕਿਵੇਂ ਜਾਗਿਆ ਨਹੀਂ ਵੀ ਸੌਂਦੇ ਨਾਲ ਆ ਰੂ ਜਾਗਦੇ ਆ ਸਰੀਰ ਵਾਲੀ ਨੀਂਦ ਦੀ ਗੱਲ ਨਹੀਂ ਸਰੀਰ ਵਾਲੀ ਨੀਂਦ ਦੀ ਗੱਲ ਨਹੀਂ ਨਹੀਂ ਉਹ ਕੁਰਬਾਨੀ ਤੋਂ ਪਰਮਤੋ ਕਿਤੇ ਅਸੀਂ ਕਰ ਸਕਦੇ ਪੈੜੀ ਕੁਰਬਾਨੀ ਵਾਲੀ ਗੱਲ ਕੋਈ ਤੇ ਖਰਾਬ ਤਨ ਮੈਂ ਜੋ ਕਹਿੰਦੀ ਹੈ ਤੇ ਅਸੀਂ ਨਹੀਂ ਜਾ ਸਕਦੇ ਜਾਗਦਾ ਰਹਿੰਦੀ ਇਹ ਗੱਲ ਹੈ ਜਾਗਦਾ ਰਹੇ ਤਰੱਕ ਜਲਾਉਂਦਾ ਆਪਣੇ ਉਹ ਵਿਚ ਰਹਿਣੇ ਨੇ ਸੌਂਦੇ ਤੂੰ ਵੀ ਜਾ ਕੇ ਢੋਕੂਗਾ دویل جا کے अपनी لین پاڑ जूगा گا سو या یا پھٹوا دے جل دوں گا नहीं بکا है, نہیں ڈالنا ہے کھڈے تے کھھی रेखा है, بڑی रेखा नहीं ہے او رےھا نہیں جلنے اسی سو گیا پھر پتہ ہی نہیں کتر پایا تے رہ گیا اے نہیں ਕਦਾ ਪੜੇ ਜਾ ਲੈ ਮਨ ਇਹ ਨਹੀਂ ਜਾਂਦਾ ਸੱਚ ਬਾਣ ਕਦੇ ਝੂੜਵਾ ਨੂੰ ਕਦੇ ਝੂੜਵਾ ਨੂੰ ਕਦੇ ਸੱਚ ਬਾਣ ਕਦੇ ਕੋਧੂ ਕਦੇ ਪਾਪ ਕਦੇ ਪਾਪ ਕਦੇ ਫੁੱਲ ਉਹ ਜਿਹੜੀ ਐ ਐ ਚਾਲ ਦੱਸੀ ਹੋਈ ਆ ਇਹਨੂੰ ਸੱਪ ਤਾਂ ਗਿਆ ਜਿਹੜਾ ਕਿਡਾ ਮਿਲਦਾ ਚੱਲਦਾ ਸਾਰੇ ਸੱਪ ਨੇ ਉਹ ਸੱਪ ਕਦੇ ਐਹ ਜਣੀ ਹੁੰਦੇ ਚੱਲੀ ਐ ਸੱਪ ਵਾਲੀ ਚਾਲੀ ਭਗਤਾਂ ਦੀ ਚਾਲ ਦਰਾਲੀ ਦੁਨੀਆ ਦੀ ਜਿਹੜੀ ਚਾਲ ਐਵੇਂ ਹੀ ਆ ਸਾ ਪੋਜਾ ਆਪ ਤਾਂ ਹੀ ਚੱਲਨੀ ਹੈ ਬਿਲਕੁਲ ਦੁੱਤ ਦੁੱਤ ਰੇਲ ਚਲੋ ਤੁਮ ਲਾਤਰ ਕੋ ਟੱਕਾ ਦੇ ਵੀਟ ਕੋ ਜਾ ਹਟਕਾਜੇ ਤੁਹਾਡੇ ਜੀ ਜੇ ਤੁਸੀਂ ਚਲੇਗਾ ਨਾ ਤੂੰ ਇਹ ਚ ਕੋਈ ਟਕਰਾਜੂ ਬਾਤ ਉਧਰ ਆਇੰਦੋਂ ਰਣੇ ਸਿਆ ਨੂੰ ਜਾਂਦੇ ਨਾ ਤਾਂ ਟੱਕਰ ਪੱਜੇ ਜਾਣੀ ਬਤਾਣਾ ਨਹੀਂ ਹੋ ਜਾਦੀ ਸਾਡੀ ਬੱਜੀ ਅਖਾਣੇ ਨੂੰ ਬਚਾਉਣਾ ਵੰਦਾ ਕੋਈ ਸੁਤਾ ਬੈਠਾ ਡਰਾਈਵਰ ਹੁੰਦਾ ਹੋਵੇ ਮੂਰੇ ਤੇ ਅਦਾ ਕਹਦਾ ਸੁਤਾ ਪਿਆ ਹਾਂ ਆਪਣੇ ਕਾਰ ਨੂੰ ਖਿਜਾ ਲਓ ਸੌਂ ਅੱਖ ਵੀ ਲੱਗੇ ਜਾਂਦੀ ਆਦਮੀ ਦੀ ਅਫਰ ਦਿਖੇ ਜਾਂਦਾ ਕਿ ਤਾਂ ਖਲਤਾ ਰਹੇ ਹਨ ਉਹ ਸੁងਿਆ ਹੋਊਗਾ ਆਪ ਨੂੰ ਬੁਜਾਉਣ ਨੂੰ ਕਹੂਗਾ ਜਾਗ ਦੇ ਦੀ ਜਾਗ ਦੇ ਦੇ ਬੈਠ ਉਹਨੇ ਤੋਂ ਕੋਤਾ ਸਾਹਿਬ ਦੀ ਹੈ ਨਹੀਂ ਉਹਨਾਂ ਬੋਲਤਾ ਅਸੀਂ ਦੇਖੀ ਦੁਨੀਆ ਗੱਲ ਪਹਿਣ ਨੂੰ ਫਿਰ ਅਸੀਂ ਨਹੀਂ ਗੱਲ ਪਹਿਣਾ ਕਿਸੇ ਨੂੰ ਉਹਦਾ ਤਾਂ ਜਿਹਨੇ ਜਾਣਿਆ ਜਦ ਕੋਈ ਸਾਡਾ ਬਿਲਕੁਲ ਸਰੀਰ ਬੜਾ ਹੀ ਤੋਂ ਉਹ ਲੋੜਨ ਦੀ ਗੱਲ ਕੀਤੀ ਹੈ ਲੜਣਾ ਨਹੀਂ ਚਾਲੂ ਕਰੋ ਅਜਾ ਸਹੀ ਹਾਂਜੀ ਪ੍ਰਭ ਕੇ ਸਿਮਰਨ ਭੌਣਾ ਵਿਆਪੈ ਪ੍ਰਭ ਕੇ ਸਿਮਰਨ ਭੌਣਾ ਵਿਆਪੈ ਕੋਈ ਜਦ ਦੁੱਖ ਜਾਂ ਨਸਾ ਹੈ ਤੇ ਰਹਿ ਗਿਆ ਫਿਰ ਉੱਪਰ ਹੁੰਦਾ ਦੁੱਖ ਦਾ ਦੂਰੇ ਹੋ ਗਿਆ ਭੌਣਾ ਵਿਆਪੈ ਦਰ ਵੀ ਵੱਧ ਮੁੜ ਕੇ ਘਟਿਆ ਹੋਇਆ ਦਰ ਬਿਆਪਰ ਦਾ ਮਸੰਦਾ ਵੱਧ ਨੂੰ ਬਹੁਤ ਹੱਦ ਤੱਕ ਡਰ ਕਰ ਅਸਲ ਡਰ ਹੁੰਦਾ ਬਿਆਪਰਾਂ ਨੂੰ ਡਰ ਹੁੰਦਾ ਜਿੰਪੋਂ ਦਾ ਨਹੀਂ ਉਹ ਬਗਨੇ ਪੂਣਾ ਨਹੀਂ ਬਿਆਪਰਾਂ ਵੱਧਣ ਡੱਡਾ ਡਾਰੋਪੇ ਜਾ ਨਾ ਜਾਏ ਜਾਂਦਾ ਹੈਗਾ ਉਹ ਘੜੇ ਦਾ ਸੱਚ ਨੂੰ ਹੈਗਾ ਪਹਿਲੇ ਭਗਤ ਨਾ हो ਦੇ ਪੈਤਾ ਹੈ ਕਿ ਪਰ ਇਹ ਨੂੰ ਸੱਚ ਫੜ ਲੱਗਦੇ ਨੇ ਉਹ ਦੋਈ ਟਾਣੇ ਨਹੀਂ ਫੁੱਟਦੀ ਦੂਏ ਫੜ ਲੱਗਣ ਵਾਲੀ ਕਿੱਥੇ ਆ ਭਗਤ ਜਿਹੇ ਸਾਈਡ ਤੇ ਡਰਨੇ ਹੋ ਜਿਹੜਾ ਡਰਤਾ ਉਹ ਹੈ ਪੈਦਾ ਜ਼ਰੂਰ ਪਰ ਸੱਚ ਵਾਲੇ ਫੜ ਜਿਹੜੇ ਟਾਣੇ ਨੂੰ ਸੱਚ ਫੜ ਉਹੀ ਲਗਦਾ ਫੇਰ ਫੁੱਟ ਗਿਆ ਨਾ ਝੋੜ ਤੇ ਫਲ ਤੇ ਪੈਦਾ ਹੋ ਜਾਣਾ ਉਹ ਫੇਰ ਨਾ ਪੈਦਾ ਹੋ ਜਵੇ ਐਦਾਂ ਗੁਰਨ ਵਾਲੀਆਂ ਦਾਣੀਆਂ ਹੈਗੀਆਂ ਨੇ ਓਗਣ ਵਾਲੀਆਂ ਵੱਢੀ ਹੋ ਜੂਦ ਤਰਸਦਾ ਤਰਸਦੀ ਫੁੱਟਿਆ ਪੈ ਵਾਲਾ ਭਾਂਡੇ ਦੀ ਸਿੱਟੇ ਲੋਭ ਹੈਗਾ ਪਰ ਲੋਭ ਕਾਹਦਾ ਲੋਭ ਉਹਨਾਂ ਪੈ ਹੈਗਾ ਭੈ ਹੁਣ ਸੱਚ ਦਾ ਝੂਠ ਦਾ ਪੈਦੀਆ ਮਾਇਆ ਦਾ ਝੂਠੇ ਦਾ ਪੈਦੀਆ ਸਦਾ ਦਰਜ ਚੱਲ ਜਾਏ ਗੁਣਾ ਵਾਲਾ ਜਿਹੜਾ ਹੈ ਨਾ ਗੁਣਾ ਤੇ ਫਲ ਦਰਸਤ ਹੋਈਏ ਹਮ ਨੂੰ ਫਲ ਗੁਣਾ ਦਾ ਲਗੇ ਜਿਹੜੇ ਸੀ ਨਾ ਜੇ ਟਾਣੀ ਨੂੰ ਗੁਣਾ ਲੋ ਕਰਤੀ ਜਗਤੀ ਕਰਤੀ ਉਹ ਗੁਣਾ ਵਾਲੇ ਸਾਰਾ ਉਹ ਰਾਜ ਗੁਣਾ ਵਾਲੇ ਜਾਣ ਲੱਗੇ खुनालियां निकल आ गया इस करके कि आप पे नाम है वे वो जड़ा उनके व्यापया होसी डर आ भी इसी अंदर ए भी आनंदर सी ए भी सीगा अंदर वो दुवा संसारी सी संसारी डर है जो सारी कट देती है या खावा ये दोबारा पर हो गए ता वोण दोबारा भी फुल्ने हो ਆਪਣਾ ਨਹੀਂ ਜਾਏਗਾ ਪੌਣਾ ਦੇਣਾ ਬਹਿਲੇ ਤੇ ਆਪੈ ਦਾ ਕੋਈ ਵਰਤਿਆ ਕਿ ਜੇ ਡਰੇ ਤਾਂ ਫਿਰ ਦਾ ਲੱਗਾ ਉੱਥੇ ਆਇਆ ਹੋਇਆ ਡੱਡਾ ਡਾਰੋ ਪਜਾਇ ਡਰ ਜਾਈ ਜੇ ਡਰ ਪੈਦਾ ਹੋ ਜਵੇ ਸੱਚ ਦਾ ਫੇਰਾ ਦੁਨਿਆਵੀ ਦਲਦੀ ਰਹਿੰਦਾ ਮਰਦ ਦਾ ਰੁਸਨ ਦਾ ਨਫੇ ਦਾ ਜਸ ਦਾ ਪਜਾਦਾ ਦੂਰ ਹੋ ਜਾਂਦਾ ਛੇ ਪ੍ਰਕਾਰ ਦਾ ਡਰ ਤੁਲੇ ਗਿਆ ਜਾਸ ਆਪ ਜਾਸ ਜਦੋਂ ਵੰਨਹਾਂ ਨਾਦੀ ਹਾਂਜੀ ਲਾਹ ਛੇ ਚੀਜ਼ਾਂ ਦਾ ਦਰਾਰ ਆਪ ਛੇ ਚੀਜ਼ਾਂ ਦਾ ਦਰਾਰ ਖਤਮ ਹੋ ਜਾਂਦੀ ਜੇ ਪਾਣੀ ਦਾ ਦਰਾਰ ਮੰਨਣ ਵਿੱਚ ਪਾਣੀ ਦਾ ਦਰਾਰ ਵੀ ਪਾਣੀ ਜਰਣ ਪਾਣੀ ਦਾ ਵਾਹ ਨਹੀਂ ਜਾਣਾ ਇਹ ਦਰ ਮੰਨਣ ਵਿੱਚ ਤਾਂ 6 ਪ੍ਰਕਾਰ ਦਾ ਦਰ ਖਤਮ ਹੋ ਜਾਂਦਾ ਇਕ ਦਰ ਮੰਨਣ ਲਵੇ ਖੱਤੀ ਦਾ ਝੂਠ ਦਾ ਡਰ ਖਤਮ ਪਰ ਜੇ ਸਮਨ ਦਿਸਰ ਜਵੇ ਉਹ ਡਰ ਫੇਰ ਵਿਆਪ ਜਾਂਦੇ ਨੇ ਸਪਿਆ क्यों ਕਿਉਂ ਕਿਉਂ ਵਿਆਪ ਜਾਂਦੇ ਨੇ ਤੇ ਕਿਆ ਹੋਇਆ ਇਹ ਵੀ ਬਰ ਮੇਂ ਚਲਤੇ ਕੋ ਲਿਆ ਉਹ ਕਹਿੰਦਾ ਗਿਆ ਸੀ ਉਹ ਕਹਿੰਦਾ ਗਿਆ ਸੀ ਆਪ ਜਾਂਦੇ ਨੇ ਐਨੇ ਸੁੱਟਣਾ ਚਾਹੀਦਾ ਮੇਰਾ ਖਮੋਲਿਆ ਇਦਾਂ ਤਾਂ ਫੇਰਾ ਜਣਾ ਪੈਂਦਾ ਵਾਲੀ ਬੋਬੂ ਵੀ ਇਹ ਆੜਾਣੀ ਫੁੱਟ ਇੱਥੇ ਵੜ ਦੋ ਇਹ ਜੇ ਫੁੱਟਾਂ ਲੱਗੀਆਂ ਰਾਣੀ ਇੱਥੇ ਨੱਪ ਇਹਦਾ ਉਹ ਤੇ ਰਸਾਈ ਲਾਇਆ ਗਿਆ ਪੋਸਟਾ ਤੋਂ ਸਾਫ ਕਰੇ ਰਹੀ ਜਾਨੀ ਟਾਣੀ ਟੁੱਟੂਗੀ ਫੜਤਾ ਜਾਂ ਲੱਗੂਗਾ ਲੱਗੂਗਾ ਟਾਣੀ ਮਿੱਟ ਜਾ ਦੇ ਨਾਲੇ ਬਣਦੀ ਹੈ ਇਹਨਾਂ ਜੀਤਾ ਲੱਗੂ ਵੀ ਲੱਗੂਗੀ ਪੇੜ ਦੀ ਉਹ ਕਹਿੰਦੇ ਸੀ ਵੀ ਜੇ ਖਿਆਲ ਮਾੜਾ ਹੋਵੇ ਉਹਨੂੰ ਤਿਆਗ ਦਈਏ ਤਾਂ ਪਾਪ ਨਹੀਂ ਖਿਆਲ ਮਾੜਾ ਆਉਂਦਾ ਹੈ ਪਾਪ ਨਹੀਂ ਗੁਰੂ ਕਹਿੰਦੇ ਨਹੀਂ ਖਿਆਲ ਪੈਦਾ ਹੁੰਨੂ ਜਿਹੜੇ ਨਾ ਜੀ ਲਾਕੀ ਲਾਸ ਹੋ ਗਏ ਬੁੱਧ ਸਾਹਿਬ ਆਪ ਕਹਿੰਦੇ ਨੇ ਇਹਨੂੰ ਫੇਜ਼ ਵਿੱਚ ਬੁੱਧ ਸਾਹਿਬ ਸੀ ही ਵਿੱਚ ਇੱਛਾ ਹੋਣੀ ਹੀ ਬਾਪ ਹੈ ਇੱਛਾ ਹੀ ਤੋਂ ਪੈਦਾ ਹੁੰਦੀ ਟਾਣੀਆਂ ਕਿਉਂ ਪੈਦਾ ਹੁੰਨ ਤੇ ਜੇ ਟਾਣੀ ਨੂੰ ਫੜਨੀ ਲੱਗਣ ਵਿਣਾ ਤੁਸੀਂ ਉਹ ਟਾਣੀ ਦੀ ਛਾਂ ਵੀ ਮਾੜੀ ਜਿਹੜਾ ਉਹਦਾ ਪੱਤਾ ਵੀ ਖਾਲੂ ਉਹ ਨੂੰ ਕਿਤੇ ਸੋਰੰਗ ਹਾਂਜੀ ਪ੍ਰਭੂ ਕੇ ਸ਼ਰਣ ਗੋਪਨਾ ਸੰਤਪਾ ਹੈ ਪ੍ਰਭੂ ਕੇ ਸ਼ਰਣ ਦੂ ਗ੍ਰੰਥ ਸੰਤਪਾ ਪ੍ਰਭ ਦੇ ਸਮਣ ਦੀਆਂ ਗੱਲਾਂ ਨੇ ਸੰਤ ਸਮਣ ਕਰਦੇ ਨੇ ਇਹ ਗੱਲਾਂ ਨੇ ਲਾਲਾ ਜਿਗਾ ਦਾ ਹੋਇਆ ਇਹ ਸ਼ਰਧਾ ਪੂਰੀ ਹੋਣ ਕਰ ਰਹੇ ਹੈ ਅਸਾਂ ਸ਼ਰਧਾ ਪੂਰੀ ਏ ਇਹ ਲੋਕ পাগল ਨੇ ਉਹ ਸੰਤਾ ਰਾਮ ਜੀ ਦੇ ਨਾਲ ਉਹਨਾਂ ਨੇ ਕੀ ਹੈ ਉਹਦਾ ਆਪਣਾ ਉੱਥੇ ਬਹਿ ਗਏ ਆ ਬਣਾਉਣਾ ਦੀ ਵਧੀਆ ਚੱਲਦੀ ਹੈ ਗੋਈ ਦਾ ਜਿਹਨਾਂ ਲੋਕਾਂ ਨੇ ਲੋਕ পাগল ਨੇ ਸੋ ਜੀ ਪ੍ਰਾਪਾਇਆ ਸਭਨਾ ਦੁੱਖ ਦਾ ਸੰਤਾਪ ਹੈ ਦੁੱਖォ ਸੰਤਾਪ ਦਾ ਤਾਂ ਮਤਲਬ ਇਹ ਨਹੀਂ ਹੈ ਦੁੱਖ ਦਾ ਹਉਦ ਦਾ ਮਤਲਬ ਹੈ ਜਿਹੜੇ ਤੇ ਪਰਕਾਰ ਦੇ ਚਿਤਾਂ ਮਨ ਸਾੜੀਏ ਇਦਨ ਕਾ ਬਲਵਾਨ ਹਾਰਾ ਸਤਾ ਪੈਣਾ ਆਲਾ ਹੋ ਜਵੇ ਹੋਣਾ ਹੋ ਜਵੇ ਨੁਕਸਾਨ ਆ ਤੇ ਉੱਥੇ ਹੀ ਪਰਿਵਾਰ ਦੇ ਤਿੰਨ ਪ੍ਰਕਾਰ ਦੇ ਅੱਜ ਦੇ ਪ੍ਰਕਾਰ ਦੇ ਨੇ ਦੁੱਖ ਇਹ ਤੇ ਹੰਦੀ ਲਾਭ ਦਾ ਇਤਹਾਸ ਹੋ ਤੇ ਨੇ ਉਹਨਾਂ ਕਹੇ ਛੇ ਦਿਤੇ ਤੈਨੂੰ ਤੇਂਗਾ ਮੰਨਦਾ ਜਸਨ ਨੂੰ ਜਗਾ ਮੰਨਦਾ ਆਪੇ ਜਸਨ ਵੜਾ ਮੰਨਦਾ ਤੇ ਕਿਨੇ ਵੜੇ ਨਹੀਂ ਹੈ ਹਾਨੀ ਵਾੜੀ ਆ ਲਾਭ ਦਾ ਜਗਾ ਹੈ ਸਾਭ ਤਾਂ ਚੰਗਾ ਹਾਨੀ ਵਾੜੀ ਹੈ ਹਾਨੀ ਦੇ ਦੁੱਖ ਹੈ ਜਪੜਾ ਦਾ ਚੰਗਾ ਖੋਜੀ ਨੂੰ ਨੋਦਾ ਤੇ ਬੰਦੇ ਦੇ ਦੁੱਖ ਹੈ ਪ੍ਰਭ ਕਾਸਿ ਮਿਰਨ ਸਾਧਕੇ ਸੰਗ ਸਾਧਕੇ ਸੰਗ ਸਾਧ ਸੰਦਨੇ ਸੰਗੀ ਹੈ ਸਾਧਕੇ ਸੰਗੀ प्रावका सवरो साधक संगी साथ कै संगी प्रावका सवर नहीं हो सकदा ओ मैं जर जन्ना जर मान साथ देली जातो साधक संगी संगी मन बुद्धि नु कह तू अपना जन्ना जर मान नाल दा साथ दी नहीं प्रावका सवर हो ही साद तो बहुत छगी दू ठिकाने ਸਾਧਾਨੀ ਉਹ ਨਾਲੇ ਬਰਬਾਦ ਕਾ ਸਮਾਂ ਨਹੀਂ ਹੋ ਰਹਾ ਸਾਧ ਕਰਿਆ ਲੱਗੀ ਹੋਵੇ ਵਦਨਾ ਸਾਧ ਕਰਿਆ ਲੱਗੀ ਹੈ ਸਾਧ ਨਾਲ ਸਾਧ ਕਰਿਆ ਸਾਧਨਾ ਸਾਧ ਕਰਕੇ ਕਿਹਾ ਮਨ ਸਾਧ ਕੋਣਾ ਬੈਠ ਕੇ ਜੇ ਸਾਧ ਹੋਆ ਹੁੰਦਾ ਤਾਂ ਸਿਰ ਉਪੜੋਂ ਨਾ ਹੁੰਦੇ ਪ੍ਰਭੂ ਦਾ ਸਰੂਪ ਸੇਮਰਨ ਸਾਧਕੇ ਸੰਗੀ ਸਾਧਕ ਹੈ ਸਾਧਕੇ ਸੰਗੀ ਸਰਵਨ ਨਾਨਕ ਹਰ ਰੰਗੀ ਆਹ ਸਰਵਨ ਨਾਨਕ ਨਾਨਕ ਹਰ ਰੰਗੀ ਇਹਨੂੰ ਇੱਕ ਅਰਥ ਆ ਜਾਂਦਾ ਪੜਦੇ ਸਾਰਾ ਅਰਥ ਆਪੇ ਸਮਝ ਆ ਜਾਂਦਾ ਗਲਤ ਪੜਦੇ ਆ ਅਸਲ ਪੜਨਾ ਹੀ ਸਾਨੂੰ ਗਲਤ ਸੁਭਾਅ ਹੋਇਆ ਹੈ ਜਿੱਦਾਂ ਸਾਡੀ ਪੜ੍ਹਾਈ ਠੀਕ ਹੋ ਗਈ ਅੱਦੇ ਹੱਦ ਤੱਕ ਤੁਹਾਨੂੰ ਆਪੇ ਆ ਜਾਣੀ ਤੇ ਪੜ੍ਹਾਈ ਉਹ ਪੜ੍ਹਾਈ ਦੀ ਕੀ ਲਿਖਿਆ ਕੀ ਆ ਸੀ ਕੀ ਪੜ੍ਹ ਰਹੇ ਹਾਂ ਤਰਪੁਰ ਦਾ ਹਨ ਹਰ ਰੰਗੀ ਸਭ ਕਾ ਸਿਮਰਨ ਸਾਥ ਕੈ ਸੰਗੀ ਸੰਗੀ ਆਪਣੇ ਸੰਗੀ ਨੂੰ ਸਾਥ ਤੋ ਬਾਦ ਜਿੰਨਾ ਚਿਰ ਮਨ ਸਾਥ ਦੇਈ ਜਾਂਦਾ ਮਨ ਖੋਤੇ ਪਾਸੇ ਨੂੰ ਨਹੀਂ ਛੱਡਦਾ ਸੁਝੇ ਨਹੀਂ ਸੱਚਾਲੇ ਮਾਰਗ ਤੇ ਹੋਨਾ ਚਰਪ ਕੋ ਸਮਝ ਹੋ ਗਈ ਜੀ ਫਜ਼ੂਲ ਆ ਵੀ ਮਾਲਾ ਲੈ ਕੇ ਬੈਠੋ ਉਹ ਵੀ ਗੱਲ ਇਹੀ ਕਹਿੰਦੇ ਨੇ ਮੈਂ ਨਹੀਂ ਮਾਲਾ ਫਿਰ ਮਨ ਤਾਂ ਬਾਜੀ ਵੀ ਇਹ ਦੇ ਬਰ ਬਾਤ ਕਰੰਦੀ ਤਾਂ ਤੇਤੋ ਸਰ ਕੀ ਪੁੱਛ ਰਹੀ ਏ ਤੇ ਬੜੇ ਮੈਂ ਬਾਤ ਕਰਨਾ ਤੇ ਤੇ ਕੀ ਰਾਣਾ ਮਾਲਾ ਤਾਂ ਮੈਂ ਵੀ ਬਣਾ ਲਿਆ ਨੂੰ ਮੇ ਤੋਂ ਲੈਦਾ ਸੁਹਣਾ ਐ ਜੀ ਗੱਲ ਇਹ ਹੈ ਕਿ ਮਨ ਕਿਵੇਂ ਸਾਧਿਆ ਜਾਵੇ ਤੁਸਾਂ ਤਾਂ ਇਹ ਸੀ ਸੰਤ ਨੇ ਆਪਣਾ ਸੰਤ ਦਾ ਆਪਣਾ ਠੀਕ ਨਹੀਂ ਮਨ ਸਾਧਿਆ ਹੋਏ ਨਹੀਂ ਅਜੇ ਮੈਨੂੰ ਵਦੋਂ ਤੱਕ ਬੰਨ ਲਾਵਾ ਨਹੀਂ ਡਾਪੜਾ ਬਾਲਾ ਲੈ ਲੈ ਬਾਲਾ ਵਾਸਤੇ ਮਾਨਾ ਜੁੜ ਜਾਇਆ ਹੋਇਆ ਉਹ ਜਿਹੜੇ ਹੁੰਦੇ ਨੇ ਨਾ ਛੋਟੇ ਬੱਚੇ 2 2 ਸਾਲ ਦੇ ਨੇ ਸਕੂਲ ਵਿੱਚ ਲੋਕ ਕਰ ਜਾਂਦੇ ਨੇ ਬੇਲਿੰਸ ਦੋ ਜਿਹੜੇ ਉੱਤੇ ਖਾਮ ਰਹਿਣ ਗਿਆ ਬਹਿ ਜਾਣ ਗਿਆ ਧਿਆਨ ਪੜਾਣਾ ਜਿਹੜੂ ਬੈਠਾ ਦਾ ਪੜ੍ਹਦੇ ਤੇ ਪਹਿਲਾਂ ਦਾ ਜਿਹੜਾ ਪੜਨ ਤੋਂ ਪਹਿਲਾਂ ਦਾ ਜਿਹੜਾ ਹੈ ਨੂ ਕੋਰਸ ਪੜਾਈ ਤੋਂ ਪਹਿਲਾਂ ਦਾ ਉਹ ਹੈ ਵਾਲਾ ਵਾਲਿਆ ਦਾ ਸਵਾਦੀਆ ਜੀ ਇਹ ਜਿਹੜੇ ਧਰਮ ਦੇ ਇਹ ਧਰਮ ਦੇ ਮਾਰਗ ਤੋਂ ਚੱਲਣ ਤੇ ਪਹਿਲਾਂ ਦਾ ਕੋਰਸ ਹੈ ਸਾਰਾ ਜੋ ਹੋ ਰਿਹਾ ਹੈ ਧਰਮ ਦਾ ਤਾਂ ਗੱਲ ਦੀ ਗੱਲ ਜਿੱਦਾਂ ਸਕੂਲ ਸ਼ੁਰੂ ਹੋ ਜਾਂਦਾ ਫਿਰ ਤੁਹਾਨੂੰ ਕੋ ਪੜਾਉਂਦੇ ਨੇ ਫਿਰ ਤੁਹਾਨੂੰ ਦੱਸਦੇ ਨੇ ਫੋਦਾ ਦੇ ਨੂੰ ਜੇ ਜੇ ਤੇ ਸੱਚ ਨੂੰ ਜਾਈ ਇਹ ਤਾਂ ਸਿਰਫ ਧਰਮ ਦੇ ਸਕੂਲ ਚ ਬੈਠਣ ਦੀ ਸਿੱਖਿਆ ਉਹਦੀ ਦਿੱਤੇ ਬੈਠਣ ਦੀ ਜੇਕਰ ਦਾਦ ਜਿਹਨੂੰ ਮੰਨ ਦੇ ਉਹਨੂੰ ਪਤਾ ਹੋਵੇ ਸਾਡਾ ਕੰਮ ਕੀ ਹੈ ਸਾਡਾ ਰੋਲ ਕੀ ਹੈ ਇਹਨਾਂ ਨੂੰ ਤਾਂ ਇਹ ਬਧੀ ਪਤਾ ਵੀ ਰੋਲ ਕੀ ਹੈ ਜਦੋਂ ਇਹਦਾ ਐਡੀ ਹੋ ਸਿੱਖਿਆ ਹੋਰ ਕੁਝ ਤਕਾਲੀ ਮਨਵਾਰ ਕੇ ਬੈਜ ਬੇ ਤੇਰੇ ਤੇ ਪਰੋਤਾ ਗੁਰਮਾਰਗ ਉਂ ਬਠੇ ਤਾਂ ਮਾਰਬਲ ਤੋਂ ਦੇਖਦੇ ਵੀ ਅਸੀਂ ਦੇ ਰਿਹਾ ਨੂੰ ਆਪਣੀ ਨੀਤਰਾ ਠੀਕ ਕਰ ਲਿਆ ਕਰ ਜੋ ਝੋਕੜੇ ਦਮਾਇਆ ਦੇ ਰਹੇ ਨੇ ਆਪੇ ਸਲਾਮਤ ਗੱਡੀ ਹੈ ਜੀ ਆਪਾਂ ਇਹ ਤੋਂ ਵਧੀਆ ਲਈਏ ਉਹਦਾ ਚੱਲੇ ਹੀ ਹੋ ਚੱਦਿਏ ਪਰ ਮੈਂ ਉਹ ਜਿਹੜੇ ਮਾਲਾ ਮੂਲਾ ਵੀ ਦਿੱਤੇ ਸੰਸਕੀ ਉਹ ਵੀ ਇਹ ਜੋ ਬੈਠਾ ਨੂੰ ਸੁਣਾ ਨੇ ਉੱਥੇ ਕੌਣ ਧਰਮ ਦੇ ਵਿੱਚ ਪੱਕਾ ਰਹਿ ਜੂ ਕੌਣ ਨਹੀਂ ਰਹਿ ਜੂ ਉੱਥੇ ਛੁਰੂ ਛੁਰੂ ਜੇ ਵੀ ਹੁਣ ਸਰ ਆਪੇ ਪਤਾ ਦਿੰਦੇ ਕਿ ਪੜਾਈ ਸ਼ੁਰੂ ਕਰ ਦੋ ਗੁਰੂ ਘਰ ਦਾ ਪੜਾਈ ਸ਼ੁਰੂ ਕਰੋ ਰੋਜ਼ ਕੋਈ ਆਓ ਸੁਣੋ ਚੱਲੇ ਜਾਓ ਕੋਈ ਮੰਤੂ ਕੋਈ ਨਾਵਨ ਹੋਣੀ ਹੈ ਲੈ ਮੰਨ ਦੋ ਚੱਲੋ ਨਾਵਨ ਤੋਂ ਆਪਾਂ ਕੀ ਫਰਕ ਪੈਣਾ ਬਦਲ ਪੈਣਾ ਜਾਂਦਾ ਹੈ ਤੁ ਉਹਨੂੰ ਕੀ ਵਰਕਪਰ ਦਾ ਜੇ ਸੜਕਾਂ ਹੀ ਰਾਜ ਚੱਪਕੀ ਜੋ ਕਹਿ ਵੀ ਇੱਛੇ ਦਾ ਯਾਰੋ ਆ ਕਾਨੂੰਨ ਨਾ ਕੀ ਬੇਸ ਕਰਦਾ ਪਬਲਿਕ ਉਹਨੂੰ ਕੀ ਵਰਕਪਰ ਉਹ ਗੱਲ ਕਹੀ ਜਾਣੀ ਜੀ ਇਹ ਬਣੇ ਰਹੇ ਕਰਮਾ ਚਲਾ ਲੂ ਇਦੇ ਮੁਕੱਦਰ ਚਿਆ ਕਰ ਮਾਜ ਜਿੰਮਿ ਚੱਲ ਰੂ ਤਾਂ ਹੀ ਕੁਇਰ ਕਰਿਆ ਨੋ ਕਿ ਜੇ ਇੱਕ ਤਾਂ ਮਰਵਲ ਬੁੰਦਰ ਰਾਸਤੀ ਸਭ ਪ੍ਰੋਬਲਮਾਂ ਆ ਜਾਂਦੇ ਸਭ ਹੱਟ ਦਿੱਤੀ ਇਹਦੇ ਗੁਰਬਾਣੀ ਚ ਉਹ ਕਹਿੰਦਾ ਕਿਸਾਨ ਆ ਗਿਆ ਉਹ ਵੀ ਤਾ ਕਹਿੰਦਾ ਮਰਵਲ ਬੁੰਦਰ ਕਾਸੀ ਲਈ ਵੀ ਬੁਲਾਏ ਤਕੀਦ ਨੂੰ ਬੁਲਾਏ लाख स्याने पछुए न नरवारी जाए फजीदा है ता धर्माला जे ओने गल सुन ली सकती लाख स्याने बन बनोन लग्यान वे रोब ने कदी बुद्ध ओ कोए ही गल ठीक है पर उदा है ता सिद्ध होना चाहिए जे भी को बुलाए ओने ही हटा हां ठीक है लाख स्याने पछुए लखा स्याने जड़े दुए छतर आदमी ਉਹਨੂੰ ਬੁਲਾਇਆ ਨ ਵੀ ਨਾ ਇਹ ਨਹੀਂ ਆਪਣੇ ਕਰਨੋ ਕਹਿੰਦੇ ਤੀ ਜਾਓ ਫਿਰ ਨਾ ਨਰਵਾਦੀ ਹੈ ਤੁਸੀਂ ਉਹਦੇ ਅੰਦਰ ਉਹਦੀ ਬਣੋਤੋਂ ਨਹੀਂ ਖਾਜ ਕਰ ਸਕਦੇ ਪਰ ਦੂਹੇ ਪਾਸੇ ਨਰਵਰ ਬੁੱਲ ਦੀ ਜਾਇ ਪਰ ਹੀ ਪੱਠ ਦੀ ਗਰਭ ਸਵਾ ਤੇ ਜਾ ਕੇ ਕੋਈ ਤੱਪ ਦੀ ਪੱਠੀ ਸੀ ਉਹਦੇ ਪੈਗੀ ਜਾ ਕੇ ਉਹ ਤੇ ਕੀ ਹੋਣਾ ਹੈ ਕੋਈ ਸਾਡੀ ਕਰਨਾ ਉੱਥੇ ਕਿਹੜਾ ਕੰਮ ਰੋਟਾ ਲੱਗ ਜਾਣਾ ਭਟ ਜਾ ਦੀ ਰੋਟਾ ਨਹੀਂ ਲੱਗਣਾ ਉੱਥੇ ਨਹੀਂ ਕੋਈ ਸਰਵਣ ਉਹਨੂੰ ਵੀ ਵਰਕ ਬੈਂਕਰ ਬਾਰਿਸ਼ ਪੈਦੀ ਰੰਦੀ ਜਾਂਦੀ ਥਣੇ ਕੀ ਹੈ ਕੀ ਨਹੀਂ ਹੈ ਇਹ ਨਹੀਂ ਦੇਖਦਾ ਸਿਸਟਮ ਹੈ ਇਹਦਾ ਕੋਈ ਪ੍ਰਭੂ ਜੇ اتنا ہووے کہ خاص ਤੇ تے ਤੇ جوے تے پوے نو او کہہ رہے ہیں سادوں توئی دتا اے نہیں نہیں وہاں نہ ملیا نو تے وہاں نہ ملیا کہاں جا کے سانھو دا پرشاد نے دتا گل سانھو پھیرے وار کھڑے آ رہی کر دے چلو چھٹ کے جے نہ میں ਵੱਲੇਪ ਤਾਂ ਬਣੇ ਗਏ ਹਾਂ ਚਲੋ ਕੰਮ ਖਵਾ ਇਹ ਤਾਂ ਨਹੀਂ ਕਹਿ ਸਕਦੇ ਵੀ ਸਾਨੂੰ ਦਿੱਕਾ ਕੇ ਸਨ ਅਗਰ ਹਰਿਆਣਕਾ ਦੇ ਸੱਤ ਦਾਜੀ ਬੋਲਤ ਦੀ ਦਿੱਤਾ ਸਾਨੂੰ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਛੋਟ ਸਕਦੇ ਸੀ ਕਹਿ ਕੇ ਪਰ ਹੁਣ ਕੋਈ ਨਹੀਂ ਛੋਟ ਨਹੀਂ ਸਕਦੇ ਸਾਰੇ ਬਰਾਬਰ ਕਿਸ ਤੇ ਨਾ ਵੀ ਕੋਈ ਨਹੀਂ ਸਕਦਾ ਸਾਰੇ ਨੂੰ ਬਦੇ ਚੌਪੜ ਲਾਗੋ ਜੇ ਸਾਂਝਾ ਹੈ ਬਾਹਰ ਨਾ ਗੇਰਦਾ ਨਹੀਂ ਕੁੱਕੜਾ ਆਉਣਾ ਤੇ ਸਾਡੇ ਦਾ ਜੀ ਬੰਦਰ ਜੀ ਨਹੀਂ ਬਣਦਾ ਚੌਂ ਦੀ ਕਰਨ ਦਾ ਚੌਂ ਨਹੀਂ ਕਰਨ ਦਾ ਜਿੰਮੇਵਾਰੀ ਜੇ ਵਧ ਗਈ